निरगुण तू दाता हम मूर्ख तुम चतुर श्याणे तुम सर्व कला ज्ञाता माधव ہم ایسے تو ایسا ہم پاپی تم पाप खंडन نیکوٹھا کر دے سا ڈنڈوت بندن ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਧੰਨਵਾਹੇ ਗੁਰੂ ਸਾਹਿਬ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਕਰਮ ਖੰਡ ਕੀ ਬਾਣੀ ਜੋਰ ਤਹ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਾ ਭਰਪੂਰ ਤਿਥੈ सीतो सीता महिमा महाए ताके रूप ना कथने जाहै ना ओहे मरहे ना ठागे जाहै जिनक राम वसै ਮਨ ਮਾਏ ਤਿਥੈ ਭਗਤ ਵਸ਼ ਕੇ ਲੋ ਕਰਹਿ ਆਨੰਦ ਸਚ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਮੈ ਤੇ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ साहिब श्री गुरु ग्रंथ साहिब सचे बादशाह जी दी पावन पवित्र हुजूरी अंदर दोपहर दे गुरमत दीवान दी ਆਪ ਜੀ ਹਾਜ਼ਰੀ ਪਰ ਰਹੇ ਹੋ ਆਦ ਗੁਰੂ ਸਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਮਾਨਵ ਕਲਿਆਣ ਹਿਤੂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਆਪਾਂ ਪਿਛਲੇ ਦਿਨਾ ਤੋਂ ਕਰ ਰਹੇ ਹਾਂ ਚਾਰ ਤਿੰਨ ਖੰਡ ਜਿਨ੍ਹਾਂ ਦੀ ਵਿਚਾਰ ਆਪਾਂ ਨੇ प्रारंभ कीती कल दोपहर कल संध्या और आज ते दोपहर दे दीवान विच उना पांच खंडां दी जितनी को दाते ने सोजी दिती उस अनुसार विचार आपा संपन्न करंगे करो बख्शीश सतगुरु गुरु नानक साहिब जी महाराज आप जी अपने शब्द दी कला बरताओ हृदय दा टिकाए भय भामनी बख्शो सतगुरु आप विच के भावना संयुक्त संगत दी सेवा हेतु विचार दी दात बक्षो प्यार अदब सहित साध संगत जी उच्चारण करो सतनाम श्री वाखे गुरु जी करो बख्शीश फिर उच्चारण करो जी सतनाम श्री ਵਾਖੇ ਗੁਰੂ ਜੀ ਕੱਲ ਦੁਪਹਿਰ ਦੇ ਦੀਵਾਨ ਵਿੱਚ ਪੰਜ ਖੰਡਾਂ ਦੇ ਵਿੱਚ ਜੋ ਆਰੰਭਕ ਪਹਿਲਾ ਖੰਡ ਹੈ ਧਰਮ ਖੰਡ ਉਸ ਦੀ ਵਿਚਾਰ ਗੁਰਬਖਸ਼ ਨਾਲ ਆਪਾਂ ਆਰੰਭ ਕੀਤੇ ਸਿਰਫ 2-4 ਮਿੰਟ ਜੋ ਖੁਣ ਤੱਕ ਅਸੀਂ ਖੰਡਾ ਸੰਬੰਧੀ ਵਿਚਾਰਿਆ ਹੈ ਤੇ ਵਾਰ-ਵਾਰ ਇਸ ਗੱਲ ਨੂੰ ਦੁਹਰਾਣ ਦਾ ਸਿਰਫ ਇਹਨਾ ਮਕਸਦ ਹੈ ਕਿ ਆਪ ਜੀ ਵੀ ਸਰਵਣ ਕਰ ਸਕੋ ਤੇ ਵਾਰ-ਵਾਰ ਅਰਥ ਦੁਹਰਾਨ ਦੇ ਨਾਲ ਮੇਰੇ ਵੀ ਜ਼ੇਨ ਵਿੱਚ ਇਹ ਅਰਥ ਉਤਰ ਸਕਾ ਕੱਲ ਅਸੀਂ ਆਰੰਭ ਕੀਤਾ ਸੀ ਪੰਜ ਖੰਡ ਜੋ ਸਿਰਵ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਦੀ ਬਾਣੀ ਵਿੱਚ ਹੀ ਦਿੱਤੇ ਨੇ ਹਰ ਇੱਕ ਖੰਡ ਜੋ ਹੈ ਉਹ ਦੂਸਰੇ ਖੰਡ ਦੇ ਵਿੱਚ ਪਹੁੰਚਾ ਦਿੰਦਾ ਹੈ ਦੂਸਰਾ ਖੰਡ ਉਹ ਅਸਲ ਵਿੱਚ ਪਿਛਲੇ ਖੰਡ ਵੱਲ ਇਸ਼ਾਰਾ ਕਰਦਾ ਤੇ ਅਗਾ ਨਵੀਂ ਅਵਸਥਾ ਬਖਸ਼ ਰਿਹਾ ਪਹਿਲਾ ਖੰਡ ਧਰਮ ਖੰਡ ਦੂਸਰਾ ਖੰਡ ਗਿਆਨ ਖੰਡ ਤੀਸਰਾ ਸ਼ਰਮ ਖੰਡ ਚੌਥਾ ਅੱਜ ਅਸੀਂ ਪਾਠ ਕੀਤਾ ਹੈ ਜੀ ਕਰਮ ਖੰਡ ਔਰ ਸੱਚ ਖੰਡ ਧਰਮ ਖੰਡ ਵਿੱਚ ਸਤਿਗੁਰੂ ਨੇ ਇਸ ਦ੍ਰਿਸ਼ਟ ਵਿੱਚ ਜੋ ਕੁਝ ਪਰਮਾਤਮਾ ਨੇ ਰਚਿਆ ਹੈ उस ਸੰਬੰਧੀ ਕੁਝ ਕਿਹਾ ਨਾਲੇ ਇੱਥੇ ਧਰਮ ਕਮਾਣ ਵਾਸਤੇ ਇਸ ਖਿੱਤੇ ਨੂੰ ਇਸ ਧਰਤੀ ਨੂੰ ਗੁਰੂ ਜੀ ਨੇ ਜਿਹੜਾ ਸ਼ਬਦ ਦਿੱਤਾ ਉਹ ਧਰਮਸ਼ਾਲਾ ਦਿੱਤਾ ਹੈ ਅਸੀਂ ਅਰਥ ਕੀਤੇ ਰਾਤੀ ਰੁਤੀ ਥਿਤੀ ਵਾਰ ਇਹ ਸਮਾਂ ਹੈ ਪਵਨ ਪਾਣੀ ਅਗਨੀ ਪਾਤਲ ਇਹ ਤਤ ਨਾਲ ਇਸ ਦੇ ਥਾਂ ਦਾ ਜ਼ਿਕਰ ਕੀਤਾ ਨੇ ਸਮੇਂ ਔਰ ਤਤਾਂ ਦੇ ਵਿੱਚ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਇਸ ਧਰਤੀ ਨੂੰ ਧਰਮਸ਼ਾਲਾ ਗੁਰੂ ਜੀ ਨੇ ਕਿਹਾ ਫਿਰ ਇਸ ਧਰਮਸ਼ਾਲਾ ਚ ਜਿਹੜੇ ਦ੍ਰਿਸ਼ਟਮਾਨ ਰਹਿ ਰਹੇ ਨੇ ਉਹਨਾਂ ਰੰਗ ਸ਼ਕਲਾ ਬੋਲੀਆਂ ਵੱਖੋ ਵੱਖਰੀਆਂ ਨੇ ਉਹਨਾਂ ਦਾ ਅਨੰਤਤਾ ਦੱਸੇ ਗੁਰੂ ਜੀ ਕਹਿੰਦੇ ਨੇ ਉਹ ਬੇਅੰਤ ਹੈ ਇਹ ਵੀ ਸਾਰਾ ਕੁਝ ਤਿਨ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਪਰ ਐਸ ਧਰਤੀ ਰੂਪ ਧਰਮਸ਼ਾਲਾ ਵਿੱਚ ਜੋ ਕਰਮ ਆਪਾਂ ਕਰਾਂਗੇ ਸਾਡੇ ਕਰਮਾਂ ਅਨੁਸਾਰ ਵਿਚਾਰ ਜ਼ਰੂਰ ਹੋਵੇਗੀ ਕਰਮੀ ਕਰਮੀ ਹੋਏ ਵਿਚਾਰ ਤੇ ਜਿੱਥੇ ਵਿਚਾਰ ਖੋਣੀ ਆ ਦੁਨੀਆਂ ਦਾ ਕੋਈ ਬਾਦਸ਼ਾਹ ਨਹੀਂ ਦੁਨੀਆਂ ਦੀ تعلیم حاصل ਕਰਕੇ ਬਣੇ ਕੋਈ ਜੱਜ ਨਹੀਂ ਉਸ ਦਾ ਆਪਣਾ ਦਰਬਾਰ ਸੱਚਾ ਹੈ ਤੇ ਦਰਬਾਰ ਦਾ ਮਾਲਕ ਪਰਮਾਤਮਾ ਆਪ ਵੀ ਸੱਚ ਹੈ ਕਰਮੀ ਕਰਮੀ ਕੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਸ ਤੋਂ ਨਾਲ ਇੱਕ ਬਚਨ ਕਹਿ ਦਿੱਤਾ ਕਿ ਉਸ ਦਰਬਾਰ ਦੇ ਵਿੱਚ ਸਾਰੇ ਕੇਵਲ ਮੁਜਰਮ ਨਹੀਂ ਜਾਂਦੇ ਉਸ ਦੇ ਦਰਬਾਰ ਦੇ ਵਿੱਚ ਜਿਨ੍ਹਾਂ ਦੇ ਮਸਤਕ ਉੱਪਰ ਪਰਮਾਤਮਾ ਦੀ ਰਹਿਮਤ ਦਾ ਨਿਸ਼ਾਨ ਪੈ ਜਾਂਦਾ ਹੈ ਅਸਲ 'ਚ ਉਹਦੇ ਦਰਬਾਰ 'ਚ ਸ਼ੋਭਦੇ ਨੇ ਮੈਂ ਆਪ ਨੂੰ ਬੇਨਤੀ ਕਿਉਂ ਕਰ ਲੱਗਾ ਦੁਬਾਰਾ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥ ਹੈ ਸੋਹਣ ਪੰਜ ਪ੍ਰਵਾਣ ਅੱਜ ਜਿਹੜਾ ਨਦਰੀ ਕਰਮ ਨਿਸ਼ਾਨ ਹੈ ਉਹ ਕਰਮਖੰਡ ਹੈ ਫਿਰ ਬੇਨਤੀ ਸੁਣਿਓ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਜਿਹੜਾ ਜ ਪੜਨਾ ਹੈ ਉਹ ਕਰਮ ਖੰਡ ਹੈ ਤਿੱਥੈ ਭਗਤ ਵਸੈ ਕਿ ਲੋ ਮਹਾਰੀ ਧਰਮ ਖੰਡ ਚ ਕਹਿ ਰਿਹਾ ਜਿਹੜੇ ਕਰਮ ਤੂੰ ਕਰੇਗਾ ਸੱਚ ਇਹੇ ਕਰਮਾਂ ਦੀ ਵਿਚਾਰ ਹੈ ਪਰ ਅਦਾਲਤ ਵਿੱਚ ਤਕਰੀਬਨ ਮੁਜਰਮ ਹੀ ਜ਼ਿਆਦਾ ਜਾਂਦੇ ਦੇਖਿਆ ਵਕੀਲ ਕਹੇ ਜੱਜ ਕਹੇ ਪਰ ਉਸ ਸੱਚੇ ਦੇ ਦਰਬਾਰ ਵਿੱਚ ਸੱਚ ਇਹ ਵੇ ਉਹ ਵੀ ਸ਼ੋਭਾ ਪਾnde ਪਿਆ ਜਿਨ੍ਹਾਂ ਉੱਪਰ ਰਹਿਮਤ ਹੋ ਗਈ ਉਹਦੀ ਬਖਸ਼ਿਸ਼ ਦਾ ਨਿਸ਼ਾਨ ਉਹਨਾਂ ਦੇ ਮੱਥੇ ਤੇ ਹੈ ਮਹਾਰਾਜ ਨੇ ਕਿਹਾ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੂਨ ਪੰਚ ਪਰਵਾਨ ਪੰਜ ਜਨ ਜਿਹੜੇ ਸੀ ਪਿੱਛੇ ਪੜ ਕੇ ਆਏ ਉਹ ਗੁਰਮੁਖ ਜਨ ਸ਼ੋਭਾ ਪਾ ਰਿਆ ਨਦਰੀ ਕਰਮ ਪਵੈ ਉਥੇ ਸ਼ੋਭਾ ਪਾਣ ਕੇ ਗੁਰਮਖ ਪਰ ਇਸ ਦੁਨੀਆ ਵਿੱਚ ਈਰਖਾ ਵਾਲ ਸੋਖ ਇੱਕ ਦੂਜੇ ਨੂੰ ਪਦਵੀ ਵੀ ਦਿੰਦੇ ਨੇ ਸਰਟੀਫਿਕੇਟ ਦੇ ਰਿਆ ਇਹ ਬੰਦਾ ਬੜਾ ਸੱਚਾ ਹੈ ਇਹ ਬੰਦਾ ਕੱਚਾ ਹੈ ਇਹ ਝੂਠਾ ਹੈ ਮੈਂ ਕੱਲ ਕਹਿਆ ਇਹ ਸਰਦਾਰ ਹੈ ਇਹ ਗਦਾਰ ਹੈ ਮਹਾਰਾਜ ਕਹਿੰਦੇ ਨੇ ਲੋਗੋ ਤੁਸੀਂ ਸਿਰਫ ਆਪਣੀ ਬੋਲ ਜ਼ਬਾਨ ਤੋਂ ਜੋ ਤੁਹਾਡੇ ਅੰਦਰ ਅੱਗ ਤਪਦੀ ਪਈ ਹੈ ਜੋ ਮਰਜੀ ਰੱਜ ਕੇ ਬੋਲੋ ਤੁਹਾਡੇ ਕਿਸੇ ਨੂੰ ਪਦਵੀ ਦੇਣ ਨਾਲ ਕਿਸੇ ਨੇ ਪੱਕੇ ਨਹੀਂ ਹੋ ਜਾਣਾ ਤੁਹਾਡੇ ਕਹਿਣ ਨਾਲ ਕਿਸੇ ਨੇ ਕੱਚੇ ਨਹੀਂ ਰਹਿ ਜਾਣਾ ਕੱਚ ਪਕਾਈ ਉਥੈ ਪਾਏ ਉਥੇ ਪਤਾ ਚੱਲੇਗਾ ਕਚਾਈ ਤੇ ਪਕਿਆਈ ਦਾ ਪਰ ਇਹ ਗੱਲ ਹੋਰ ਕਹੀ ਕਿ ਅੱਜ ਤੁਸੀਂ ਸਿਰਫ ਧਰਮ ਖੰਡ ਚ ਮਨੁੱਖੋ ਇਹ ਸ਼ਬਦ ਸੁਣ ਰਹੇ ਗੁਰੂ ਸਾਹਿਬ ਕਹਿ ਰਹੇ ਕੱਚ ਪਕਾਈ ਉਥੈ ਪਾਏ ਪਰ ਇਹਦਾ ਵੀ ਪਤਾ ਮੈਂ ਤੁਹਾਨੂੰ ਖੁਣ ਨਹੀਂ ਦੇ ਸਕਣਾ ਗੁਰੂ ਜੀ ਕਹਿੰਦੇ ਨੇ ਨਾਨਕ ਗਿਆਂ ਜਾ ਪੈ ਜਾਏ ਉੱਥੇ ਸਮਝ ਪਾਏਗੀ ਉੱਥੇ ਕੀ ਖੈ ਇਹ ਕਾਲਸੀ ਧਰਮ ਖੰਡ ਵਿੱਚ ਵਾਚਿਆ ਆਉ ਮੈਂ ਕਿਉਂਕਿ ਸੀ ਸੰਕੋਚਨਾ ਕਹ ਤੇ ਇਹਨਾਂ ਖੰਡਾਂ ਦਾ ਪ੍ਰਕਰਨ ਇਹ ਕਹ ਤਾਂ ਸੀ ਵਾਰ-ਵਾਰ ਉਸ ਬਚਨ ਤਿਆਰੇ ਫਿਰ ਗੁਰੂ ਜੀ ਦੀ ਧਰਮ ਖੰਡ ਦੀ ਪੌੜੀ ਤੋਂ ਬਾਅਦ ਜਦੋਂ ਬੰਦਾ ਇਸ ਧਰਮ ਵਿੱਚ ਧਰਮਕ ਮੰਨਦਾ ਫਿਰ ਯਾਦ ਰੱਖਿਓ ਇਹ ਧਰਮ ਖੰਡ ਕੇਵਲ ਬਾਹਰ ਮੁਖੀ ਵਰਤਾਰਾ ਨਹੀਂ ਧਰਮਸ਼ਾਲਾ ਵਿੱਚ ਬੈਠਾ ਉਸ ਧਰਮ ਨਾਲ ਬੰਦਾ ਜੁੜਦਾ ਹੈ ਕਿ ਜਿਸ ਧਰਮ ਨੂੰ ਰੱਬ ਨੇ ਪੈਦਾ ਕੀਤਾ ਹੈ ਚਲੋ ਸੀ ਲਫ਼ਜ਼ ਰੱਬ ਕਹਿ ਦਿੱਤਾ ਜਿਹੜਾ ਉਹਦਾ ਹੁਕਮ ਉਹਦਾ ਕਾਨੂੰਨ ਉਸ ਧਰਮ ਨਾਲ ਅੰਤਰ ਆਤਮੇ ਨਾਮ ਨਾਲ ਜੁੜਦਾ ਹੈ ਫਿਰ ਸੱਚ ਇਹ ਵੇ ਕਿ ਉਸ ਦੇ ਅੰਦਰ ਇੱਕ ਗਿਆਨ ਦੀ ਖਨੇਰੀ ਆਉਂਦੀ ਹੈ ਜਲ ਜਿਹੜੀ ਕਲ ਸਿਵਾਚੀ ਉਸ ਗਿਆਨ ਦੇ ਵਿੱਚ ਸੱਚ ਇਹ ਵੇ ਇੰਨਾ ਪ੍ਰਚੰਡ ਗਿਆਨ ਹੈ ਸਾਰੇ ਧਰਤੀ ਤੇ ਬੈਠੇ ਜਿਹੜੇ ਦੀਵਾਰਾਂ ਬਲਗਣਾ ਮਨੁੱਖ ਨੇ ਕਹਿਮ ਕੀਤੀਆਂ ਗਿਆਨ ਖੰਡ ਵਿੱਚ ਸਾਰੀਆਂ ਟੁੱਟ ਗਈਆਂ ਕਿਉਂਕਿ ਉਹ ਤੇ ਫਿਰ ਬਿਆੰਤਤਾ ਤੇ ਸਰਬ ਵਿਆਖਪਤਾ ਦੇ ਚਲਕਾਰੇ ਨੇ ਬਿਆੰਤ ਹੈ ਉਸ ਵਿੱਚ ਗੁਰੂ ਜੀ ਨੇ ਧਰਮ ਖੰਡ ਵਿੱਚ ਦ੍ਰਿਸ਼ਟਮਾਨ ਦਾ ਕਹਿਸ ਵਿੱਚ ਜੀ ਨੇ ਅਨੇਕਾਂ ਤਰੀਕਿਆਂ ਨਾਲ ਰਹਿੰਦੇ ਨੇ ਇਹਨਾਂ ਦੇ ਰੂਪ ਨੇ ਉਸ ਤੋਂ ਬਾਅਦ ਗਿਆਨ ਖੰਡ ਵਿੱਚ ਫਰਮਾਇਓ ਨੇ ਕਿ ਧਰਮ ਖੰਡ ਦਾ ਇਹੋ ਧਰਮ खंड का आखों करम फिर ये सारे अदृष्ट ने केते पवन पानी वैसंतर केते कान महेश केते भरमे कार्त रूप रंग के वेश केतिया कर्म भूमि मेर केते केते धूप देश केते इंज चंद सूर केते केते मंडल देश केते सिद्ध बुद्ध नाथ केते केते देवी वेश ਮਹਾਰਾਜ ਕਿੰਨੇ ਕੀਤੇ ਦੇਵਦਾਨ ਮੁਨ ਕੇਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਿਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਾਰੇ ਚਲੋ ਅਸੀਂ ਨਾ ਸਾਰੇ ਕਾ ਅਰਥ ਕੀਤੇ ਇੱਕ ਸ਼ਿਵਨੀ ਇੱਕ ਕ੍ਰਿਸ਼ਨ ਨਹੀਂ ਇੱਕ ਬੁੱਧ ਨਹੀਂ ਇੱਕ ਸਿੱਧ ਨਹੀਂ ਇੱਕ ਮਨ ਨਹੀਂ ਇੱਕ ਜਨ ਨਹੀਂ ਇੱਕ ਸੇਵਾਦਾਰ ਨਹੀਂ ਇੱਕ ਦੇਵਤਾ ਨਹੀਂ ਪਤਾ ਨਹੀਂ ਪਰਮਾਤਮਾ ਨੇ ਕਿੰਨੇ ਕੋ ਅਵਤਾਰ ਪੈਦਾ ਕਰ ਦਿੱਤੇ ਗਿਆਨ ਖੰਡ ਵਿੱਚ ਫਿਰ ਜਦੋਂ ਬੰਦੇ ਦਾ ਅੰਦਰ ਸੁਰਤੋਂ ਦੀ ਖੁਲਦੀ ਹੈ ਉਹਨੂੰ ਸਮਝ ਪੈਂਦੀ ਹੈ ਮੈਂ ਆਪਣੇ ਖੌਮੇ ਦੀ ਬਲਗਨ ਤੋਂ ਉੱਪਰ ਉਠਾਂ ਇਸੇ ਕਰਕੇ ਮੈਂ ਆਪਾਂ ਜਿਹੜੇ ਸੰਗੀ ਰੋਜ਼ ਕਥਾ ਸੁਣਦੇ ਰਹੇ ਮੈਂ ਆਪ ਨੂੰ ਇਹ ਗੱਲ ਵਾਰ-ਵਾਰ ਵਿੱਚ ਕਹਿੰਦਾ ਸਾਂ ਕਿ ਗੁਰੂ ਨਾਨਕ ਸਾਹਿਬ ਜਿੰਨੀ ਨਿਰਮਾਨਤਾ ਕਿਤੇ ਨਹੀਂ ਜੇ ਨਜ਼ਰ ਆਉਂਦੀ ਸਾਰੇ ਜਬਜੀ ਸਾਹਿਬ ਚ ਹੁਣ ਅੱਜ ਸ਼ਾਮ ਤੱਕ ਸਮਾਪਤੀ ਹੋਣੀ ਹੈ ਸੱਚ ਇਹ ਮੈਨੂੰ ਦੱਸੋ ਕਿਤੇ ਬਾਬਾ ਜੀ ਨੇ ਦਾਵਾ ਕੀਤਾ ਕਿਤੇ ਦੱਸੋ ਕਿਤੇ ਦਾਵਾ ਨਹੀਂ ਕੀਤਾ ਮੈਂ ਗਿਆਨੀ ਮੈਂ ਭਗਤ ਮੈਂ ਸੰਤ ਉਹਨਾਂ ਕਹਿਆ ਵੀ ਤੇਰਾ ਤਾਂ ਅੰਤ ਕੀ ਬਾਣਾ ਤੇਰੀ ਰਚੀ ਕੋਈ ਰਚਨਾ ਦਾ ਵੀ ਅਸੀਂ ਅੰਤ ਨਹੀਂ ਬਾਸਕਦੇ ਗੁਰੂ ਜੀ ਨੇ ਗਿਆਨ ਖੰਡ ਵਿੱਚ ਖੋਮੇ ਨੂੰ ਐ ਪੱਟ ਕੇ ਰੱਖ ਦਿੱਤਾ ਹੁਣ ਗਿਆਨ ਖੰਡ ਵਿੱਚ ਇੰਨਾ ਪ੍ਰਚੰਡ ਗਿਆਨ ਹੈ ਪਰ ਇਹ ਗਿਆਨ ਕਿਤਾਬੀ ਨਹੀਂ ਇਹ ਗਿਆਨ ਅਨਭਵੀਕ ਹੈ ਇਹ ਗਿਆਨ ਦਿਵ ਦ੍ਰਿਸ਼ਟੀ ਚੋਂ ਪੈਦਾ ਹੋਇਆ ਹੈ ਇਹ ਗਿਆਨ ਸੱਚ ਵਿੱਚ ਅੰਤਰ ਆਤਮੇ ਤੋਂ ਪੈਦਾ ਹੋਇਆ ਹੈ ਸੱਚ ਇਹ ਇਹ ਵੀ ਅੰਤਰ ਆਤਮੇ ਤੋਂ ਗਿਆਨ ਜਿਹੜਾ ਪੈਦਾ ਹੋਇਆ ਇਹ ਕਲਪਨਾ ਨਹੀਂ ਵੇਖੋ ਪੰਜਾਬੀ ਚ ਕਲਪਨਾ ਕਹਿੰਦੇ ਆ ਕਲੇਸ਼ ਨੂੰ ਹਿੰਦੀ ਚ ਅਸੀਂ ਕਲਪਨਾ ਕਹਿੰਦੇ ਆ ਖਿਆਲ ਦੀ ਉਡਾਰੀ ਬਣਾਣੀ ਕਲਪ ਲੈਣਾ ਜਿਵੇਂ ਕਿ ਅਸੀਂ ਮੰਨ ਲਓ ਇਹ ਗੱਲ ਹੋ ਜਾਏ ਹੁਣ ਇਹ ਜਿਹੜਾ ਗਿਆਨ ਖੰਡ ਇਹ ਕਲਪਨਿਕ ਕਾਲਪਿਕ ਨਹੀਂ ਕਿ ਇਹ ਹਕੀਕਤ ਹੈ ਸੱਚ ਇਹ ਵੇ ਜੇ ਗੁਰੂ ਜੀ ਸੱਚ ਖੰਡ ਤੱਕ ਲੈ ਪਏ ਨੇ ਤੇ ਜੇ ਉਹ ਕਲਪਨਾ ਕਰਕੇ ਕਹਿਣ ਵੀ ਅਸੀਂ ਕਲਪਿਤ ਕਰ ਲਿਆ ਨਹੀਂ ਪਿਆਰੋ ਬੜਾ ਵੱਡਾ ਝੂਠ ਬੰਦ ਗੁਰੂ ਸਾਹਿਬ ਕਹਿੰਦੇ ਆ ਮੈਂ ਤੈਨੂੰ ਗਿਆਨ ਖੰਡ ਦੀ ਹਕੀਕਤ ਦੱਸ ਰਿਹਾ ਇਹ ਕਲਪਨਾ ਨਹੀਂ ਇਹ ਧੁਰ ਅੰਤਰ ਆਤਮੇ ਤੋਂ ਅਨਪਵ ਹੋਏ ਨੇ ਜੋ ਮੈਂ ਮਾਣਿਆ ਹੈ ਗੁਰੂ ਜੀ ਨੇ ਸ਼ਬਦ ਵਰਤਿਆ ਹੁਣ ਉਸ ਤੋਂ ਬਾਅਦ ਗਿਆਨ ਖੰਡ ਉਤੇ ਸਮਾਪਤ ਹੋ ਗਿਆ ਨਾਨਕ अंत ਨਾ ਅੰਤ ਫਿਰ ਸ਼ਰਮ ਖੰਡ ਵਿੱਚ ਦੋ ਪਹਿਲੀਆਂ ਤੁਕਾਂ ਨੇ ਇਹਨੂੰ ਗੱਲ ਨੂੰ ਫਿਰ ਆਪ ਜੀ ਸੁਣਿਓ ਮੈਂ ਅਰਜ਼ ਕੀਤੀ ਗਿਆਨ ਖੰਡ ਵਾਲੀ ਪੌੜੀ 35ਵੀਂ ਪੌੜੀ ਸਮਾਪਤ ਹੋ ਗਈ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਪਰ ਇਸ ਅਵਸਥਾ ਨਾਲ ਸੰਬੰਧਿਤ ਦੋ ਤੁਕਾਂ ਉਹ ਦੋ ਤੁਕਾਂ ਨੇ ਗਿਆਨ ਖੰਡ ਮੈਂ ਗਿਆਨ ਪਰਚੰਡ ਗਿਆਨ ਦੀ ਅਵਸਥਾ ਵਿੱਚ ਗਿਆਨ ਪਰਬਲ ਹੈ ਅਗਲੀ ਆਵਾਜ਼ ਥੋੜੀ ਚਲਾਇਓ ਗਿਆਨ ਪਰਬਲ ਹੈ ਗਿਆਨ ਖੰਡ ਮੈਂ ਗਿਆਨ ਪਰਚੰਡ ਤੇ ਗੁਰੂ ਜੀ ਅੱਗੇ ਸ਼ਬਦ ਵਰਦਨ ਤਿੱਥੈ ਨਾਦ ਬినੋਦ ਕੋਡ ਆਨੰਦ ਗੁਰਮੁਖੋ ਧਿਆਨ ਦਿਆ ਜੇ ਉਸ ਖੰਡ ਵਿੱਚ ਮੈਂ ਕੱਲ ਵੀ ਕਿਹਾ ਨੌਲੇਜ ਨਹੀਂ ਕੇਵਲ ਨਾਦ ਸ਼ਬਦਾਂ ਦੀ ਗਰਜ ਹੈ ਉਸ ਵਿੱਚ ਗੁਰੂ ਜੀ ਸ਼ਬਦ ਵਰਦੇ ਨੇ ਬినੋਦ ਤਮਾਸ਼ੇ ਨਿਰੋਖਾਨੀ ਚਲ ਘਾਰੇ ਸ਼ਬਦ ਚਲੋ ਕੱਲ ਮੈਂ ਇੱਕ ਵਾਰ ਪੜਿਆ ਸੀ ਕੋਟ अनेका ਕੌਤਕ ਨੇ ਆਨੰਦ ਸੱਚ ਮੁੱਚ ਗਿਆਨ ਖੰਡ ਦੇ ਵਿੱਚ ਜੋ ਕੁਝ ਮੰਨਿਆ ਜਾ ਰਿਹਾ ਇਹ ਉਹ ਨੌਲੇਜ ਨਹੀਂ ਜਿਹੜੀ ਪਰ ਪੜ ਕੇ ਸਿਰ ਭਾਰੀ ਹੋ ਜਾਏ ਉਸ ਵਿੱਚ ਅਸਲ ਹੈ ਗਿਆਨ ਖੰਡ ਵਿੱਚ ਆਤਮਕ ਆਨੰਦ ਵਿੱਚ ਹੈ ਹੁਣ ਇਸ ਤੋਂ ਅੱਗੇ ਸੀ ਸ਼ਰਮ ਖੰਡ ਮੈਂ ਆਪ ਨੂੰ ਕੱਲ ਇੱਕ ਬੇਨਤੀ ਕੀਤੀ ਸੀ ਕਿ ਸ਼ਰਮ ਸ਼ਬਦ ਦੇ ਅਰਥ ਵਿਦਵਾਨਾਂ ਨੇ ਦੋ ਤਰੀਕੇ ਨਾਲ ਕੀਤੇ ਆ ਇੱਕ ਨਾ ਸ਼ਰਮ ਸ਼ਰਮ ਜਿਵੇਂ ਇੱਕ ਹਿੰਦੀ ਦਾ ਸ਼ਬਦ ਹੈ ਪ੍ਰਿਸ਼ਰਮ ਮਿਹਨਤ ਮੌਸਲ ਨੇ ਕਹਾ ਸੀ ਇੱਕ ਸ਼ਬਦ ਸ਼ਰਮ ਕਰਤੇ ਦਮ ਆੜ ਕੋ ਮਿਹਨਤ ਤੇ ਫਾਰਸੀ ਵਿੱਚ ਸ਼ਰਮ ਲਫ਼ਜ਼ ਦਾ ਅਰਥ ਹੈ ਲੱਜਿਆ ਜਿਵੇਂ ਸ ਆਮ ਵਰਤ ਨੇ ਸ਼ਰਮ ਸ਼ਰਮ ਨਹੀਂ ਆਉਂਦੀ ਇਹ ਕਹਿੰਦੇ ਆ ਮੈਂ ਫਿਰ ਬੇਨਤੀ ਕਰਾ ਸੰਸਕ੍ਰਿਤ ਵਿੱਚ ਸ਼ਰਮ ਮਿਹਨਤ ਫਾਰਸੀ ਵਿੱਚ ਸ਼ਬਦ ਸ਼ਰਮ ਲੱਜਿਆ ਪਰ ਅਸੀਂ ਇਹਦਾ ਅਰਥ ਸੰਸਕ੍ਰਿਤ ਵਿੱਚ ਇੱਕ ਹੋਰ ਕੀਤਾ ਸੀ ਸ਼ਰਮਨ ਇਹਦਾ ਅਰਥ ਆਨੰਦਮਈ ਮੈਂ ਤ્યાં ਫਿਰ ਬੇਨਤੀ ਕੀਤੀ ਆਪਾਂ ਪਰਿਸ਼ਰਮ ਨਹੀਂ ਕੀਤਾ ਇਸ ਨੂੰ ਆਨੰਦਮਈ ਕਿਹਾ ਕਿਉਂਕਿ ਜਿਹੜੀ ਗੱਲ ज्ञान खंड ਛੱਡ ਰਿਹਾ ਹੈ ਤਿੱਥੇ ਨਾਦ ਬినੋਦ ਕੋਡ ਆਨੰਦ ਤੇ ਆਨੰਦ ਤੋਂ ਬਾਅਦ ਜਿਹੜਾ ਖੰਡ ਸ਼ੁਰੂ ਹੋਵੇਗਾ ਕੱਲਾ ਮਿਹਨਤ ਵਾਲਾ ਨਹੀਂ ਕਿਉਂਕਿ ਆਨੰਦ ਤੋਂ ਅਗਲਾ ਸਟੈਪ ਕੀ ਹੈ ਉਸ ਫਿਰ ਗੁਰੂ ਜੀ ਨੇ ਕਿਹਾ ਸ਼ਰਮ ਖੰਡ ਕੀ ਬਾਣੀ ਰੂਪ ਫਿਰ ਅਸੀਂ ਸੁਣਿਓ ਸ਼ਰਮ ਖੰਡ ਕੀ ਜੋ ਬਾਣੀ ਹੈ ਬਨਾਵਟੇ ਤੇ ਬਾਣੀ ਦਾ ਅਰਥ ਕੀ ਬਾਣੀ ਨਹੀਂ ਮੈਂ ਲਫ਼ਜ਼ ਫਿਰ ਵਰਤਾਂਗਾ ਇੱਥੇ ਬਾਣੀ ਦਾ ਬੋਲ ਨਹੀਂ ਇੱਥੇ ਬਾਣੀ ਦਾ ਅਰਥ ਹੈ ਬਨਾਵਟ ਕਿ ਸ਼ਰਮਖੰਡ ਵਾਲੀ ਆਨੰਦਮਈ ਖੰਡ ਵਾਲੀ ਜਿਹੜੀ ਬਨਾਵਟ ਹੈ ਤੇ ਗੁਰੂ ਜੀ ਕਹਿੰਦੇ ਉੱਥੇ ਸੁੰਦਰਤਾ ਹੈ ਉੱਥੇ ਸੁਹਾਪਣ ਹੈ ਪਰ ਯਾਦ ਰੱਖਿਓ ਉਸ ਸੁੰਦਰਤਾ ਦਾ ਸੰਬੰਧ ਵਾਸ਼ਨਿਕ ਸੁੰਦਰਤਾ ਨਹੀਂ ਥੋੜਾ ਜਿਹਾ ਗੁਰਮਖੋਜ ਤਵਜੂਹ ਦੇ ਕੇ ਸੁਣੋ ਮੇਰੀ ਬੇਨਤੀ ਉਹਦਾ ਸੰਬੰਧ ਜੇ ਕਿਸੇ ਦੀ ਸ킨 ਬੜੀ ਸੋਹਣੀ ਹੈ ਕਿਸੇ ਦੀਆਂ ਅੱਖਾਂ ਬੜੀਆਂ ਸੋਹਣੀਆਂ ਨੇ ਕਿਸੇ ਦੇ ਬਸਤਰ ਬੜੇ ਸੋਹਣੇ ਨੇ ਮੈਂ ਫਿਰ ਬੇਨਤੀ ਕਰਾਂਗਾ ਕਈ ਵਰੀ ਸੁੰਦਰਤਾ ਦੇ ਵਿੱਚੋਂ ਵੀ ਤੁਰ ਅੰਦਰ ਬੰਦੇ ਦੇ ਵਾਸ਼ਨਾ ਦਾ ਬੀਜ ਫੁੱਟਦਾ ਹੈ ਪਰ ਜਿਹੜੀ ਸ਼ਰਮਖੰਡ ਦੀ ਸੁੰਦਰਤਾ ਹੈ ਉਹ ਵਾਸ਼ਨਾ ਮੁਕਤ ਹੈ ਉਹ ਸੁੰਦਰਤਾ ਹੈ ਵਿਸਮਦਕ ਹੈ ਗੁਰੂ ਜੀ ਨੇ ਕਿਹਾ ਕਿ ਦੇਖੋ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ ਉਪਮਾ ਤੁਰੈ ਉਥੇ ਘਾੜਤ ਘੜੀ ਜਾ ਰਹੀ ਹੈ ਪਰ ਨਾਲ ਸ਼ਬਦ ਕਿਹਾ ਉਸ ਅਵਸਥਾ ਨੂੰ ਕੋਈ ਸੰਸਾਰ ਦਾ ਬੰਦਾ ਜ਼ਬਾਨ ਨਾਲ ਕਹਿ ਨਹੀਂ ਸਕਦਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਉਹਨੂੰ ਕੋਈ ਕਥਨ ਨਹੀਂ ਕਰ ਸਕਦਾ ਜੇ ਕੋ ਕਹੇ ਪਿਛੇ ਪੁਛਤਾਏ ਜੋ ਕਹੇਗਾ ਉਹ ਪੁਛਤਾਏਗਾ ਤਿੱਥੈ ਘੜਿਆਏ ਸੁਰਤ ਮਤ ਮਨ ਬੁੱਧ ਬੰਦੇ ਦਾ ਅੰਤੈਸ਼ਾ ਕਰਨ ਬਿਲਕੁਲ ਘੜਿਆ ਗਿਆ ਸੱਚਮੁੱਚ ਉਹ ਵਿਸਮਾਦਤ ਕੈ ਸੁੰਦਰਤਾ ਵਿੱਚ ਹੈ ਮਹਾਰਾਜ ਕਹਿੰਦੇ ਨੇ ਉਹ ਸ਼ਰਮਖੰਡ ਵਿੱਚ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਉਥੇ ਸਿੱਧਾਂ ਦੀ ਉਥੇ ਦੇਵਤਿਆਂ ਵਾਲੀ ਜਿਹੜੀ ਹੈ ਉਹ ਘੜਤ ਘੜੀ ਜਾ ਰਹੀ ਹੈ ਇਸ ਤੋਂ ਅਗਲਾ ਜਿਹੜਾ ਖੰਡ ਖੈ ਗੁਰਮਖੋ ਇਕੱਠੇ ਨੇ ਪਿਛਲੇ ਜਿਹੜੇ ਤਿੰਨ ਖੰਡ ਸਨ ਇਹਨਾਂ ਤਿੰਨਾਂ ਦੀਆਂ ਇੱਕ ਇੱਕ ਪੌੜੀਆਂ ਨੇ ਭਾਵੇਂ ਹਰ ਪੌੜੀ ਜਿਹੜੀ ਹੈ ਉਹ ਦੂਜੇ ਖੰਡ ਵਿੱਚ ਜਾ ਕੇ ਸਾਨੂੰ ਛੱਡ ਰਹੀਏ ਵੀ ਅੱਗੇ ਚੱਲ ਪਰ ਗੁਰੂ ਜੀ ਨੇ ਕਰਮ ਖੰਡ ਤੇ ਸੱਚ ਖੰਡ ਇਹਨਾਂ ਦੀਆਂ ਦੋ ਪੌੜੀਆਂ ਨਹੀਂ ਇਹਨਾਂ ਦੀ ਸਤਿਗੁਰੂ ਨੇ ਸਿਰਫ ਤੇ ਸਿਰਫ ਇੱਕ ਪੌੜੀ ਰੱਖੀ ਹੈ ਇਹ ਦੂਜੀ ਪੌੜੀ ਨਹੀਂ ਇੱਕ ਪੌੜੀ 'ਚ ਖੰਡ ਦੋ ਨੇ ਇਹ ਗੁਰਮਖ ਪਿਆਰੇ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਸਨ ਇੱਥੇ ਕਰਮ ਖੰਡ ਤੇ ਸੱਚ ਖੰਡ ਇੱਕ ਤੇ ਮੈਂ ਆਪ ਨੂੰ ਬੇਨਤੀ ਕਰਾਂ ਇੱਥੇ ਕਰਮ ਦੇ ਲਫ਼ਜ਼ੀ ਅਰਥ ਉਚਾਰਨਿਕੋ ਹੈ ਸੰਸਕ੍ਰਿਤ ਵਿੱਚ ਕਰਮ ਦਾ ਅਰਥ ਹੈ ਕੰਮ ਤੇ ਫਾਰਸੀ ਵਿੱਚ ਕਰਮ ਦਾ ਲਫ਼ਜ਼ੀ ਅਰਥ ਹੈ ਫਜ਼ਲ ਕਿਰਪਾ ਮਿਹਰ ਸਿੱਧਾ ਲਫ਼ਜ਼ ਬਖਸ਼ਿਸ਼ ਇਹ ਮਿਹਰ ਵਾਲਾ ਖੰਡ ਹੈ ਇਹ ਬਖਸ਼ਿਸ਼ ਵਾਲਾ ਖੰਡ ਹੈ ਜਿੱਥੇ ਕਰਮ ਖੰਡ ਕਿਹਾ ਬਖਸ਼ਿਸ਼ ਵਾਲਾ ਖੰਡ ਉਸ ਦੇ ਨਾਲ ਅੱਗੇ ਸੱਚ ਖੰਡ ਕਿਹਾ ਇੰਜ ਪ੍ਰਤੀਤ ਹੁੰਦਾ ਉਹ ਕਹਿੰਦੇ ਸਨ ਕਿ ਧਰਮ ਖੰਡ ਸਾਧਨਾ ਹੈ ਗਿਆਨ ਖੰਡ ਅਨਪਵ ਹੈ ਪਰ ਉਹ ਮੰਜ਼ਲ ਨਹੀਂ ਸ਼ਰਮ ਖੰਡ ਅੱਗੇ ਫਿਰ ਘੜ ਤਕੜਿੰਦੀ ਪਈ ਏ ਪਰ ਗੁਰਮਖੋ ਜਿਹੜਾ ਕਰਮ ਖੰਡ ਦਾ ਵਸਨੀਕ ਹੋ ਜਾਏ ਉਹਦੇ ਲਈ ਸੱਚ ਖੰਡ ਦੂਜੀ ਪੌੜੀ ਨਹੀਂ ਕਿਉਂਕਿ ਬਖਸ਼ਿਸ਼ ਵਾਲੇ ਖੰਡ ਵਾਲੇ ਹੀ ਸੱਚ ਵਿੱਚ ਪਹੁੰਚਦੇ ਆ ਫਿਰ ਬਿੰਤੀ ਕਰਮ ਖੰਡ ਤੇ ਸੱਚਖੰਡ ਇੱਕ ਪੌੜੀ ਹੈ ਇੱਥੇ ਸੀ ਕਰਮ ਲਫਜ ਜਿਹੜਾ ਹੈ ਉਹ ਬਖਸ਼ ਰੂਪ ਚ ਲਿਆ ਆਖ ਹੈ ਕਿ ਕਰਮ ਖੰਡ ਕੀ ਬਾਣੀ ਜੋਰ ਫਿਰ ਸੁਣਿਓ ਗੁਰਮਖੋ ਇੱਥੇ ਬਾਣੀ ਦਾ ਅਰਥ ਬਣਾਵਟ ਆਪਾਂ ਕਰਾਂਗੇ ਇੱਥੇ ਜੋਰ ਦਾ ਅਰਥ ਆਤਮਕ ਬਲ ਜੇ ਸਾਤ ਜੋਰ ਕਰ ਵੇਖੈ ਸੋਏ ਉਹ दैवी ਬਲ ਪ੍ਰਮਾਤਮਾ ਦਾ ਜਿਹੜੇ ਬਖਸ਼ਿਸ਼ ਵਾਲੇ ਖੰਡ ਵਿੱਚ ਪਹੁੰਚ ਜਾਂਦੇ ਆ ਗੁਰੂ ਜੀ ਕਹਿ ਰਹੇ ਨੇ ਕਿ ਕਰਮ ਖੰਡ ਕੀ ਬਾਣੀ ਜੋਰ ਅਸਲ ਚ ਬਖਸ਼ਿਸ਼ ਵਾਲਾ ਜਿਹੜਾ ਖੰਡ ਹੈ ਉਹਦੀ ਬਨਾਵਟ ਜਿਹੜੀ ਹੈ ਉਹ ਬਲਸ਼ਾਲੀ ਹੈ ਉਥੇ ਤਾਕਤ ਵਾਲੇ ਨੇ ਪਰ ਇਸ ਤਾਕਤ ਵਾਲੇ ਦਾ ਅਰਥ ਧਨਾੜ ਨਹੀਂ ਧਨ ਦੀ ਤਾਕਤ ਨਹੀਂ ਪਦਵੀ ਦੀ ਤਾਕਤ ਨਹੀਂ ਇੱਥੇ ਚੇਤੇ ਰੱਖਿਓ ਸ਼ਰੀਰ ਦੀ ਤਾਕਤ ਨਹੀਂ ਇੱਥੇ ਵਿਦਿਆ ਦੀ ਤਾਕਤ ਨਹੀਂ ਇਥੇ ਪਰਿਵਾਰ ਕੁਟੰਬ ਦੀ ਤਾਕਤ ਨਹੀਂ ਗੁਰੂ ਜੀ ਕਹਿੰਦੇ ਨੇ ਇਥੇ ਤਾਕਤ ਅਸਲ ਵਿੱਚ ਉਹ दैवी ਬਲ ਹੈ ਉਹ दैवी ਸ਼ਕਤੀ ਹੈ ਜਿਹੜੀ ਪਰਮਾਤਮਾ ਦੀ ਬਖਸ਼ਿਸ਼ ਨਾਲ ਸੂਰਮਿਆਂ ਮਹਾਂ ਬਲੀਆਂ ਤੇ ਜੋਧਿਆਂ ਨੂੰ ਮਿਲਦੀ ਹੈ ਫਿਰ ਬਿੰਤੀ ਸੁਣੋ ਜੀ ਕਿਉਂਕਿ ਜਦੋਂ ਇਹ ਸ਼ਬਦ ਬਲ ਆਉਣਾ ਤੇ ਸਾਡੇ ਮਨ ਚ ਆ ਜਾਏਗਾ ਜਿਹਦੇ ਕੋਲ ਬਾਹਰ ਦਾ ਬਲ ਤਾਕਤ ਨਹੀਂ ਕਰਮਖੰਡ ਕੀ ਬਾਣੀ ਜੋਰ ਮੈਂ ਬਾਣੀ ਦਰਤ ਬਣਾਵਟ ਕੀਤਾ ਮੈਨੂੰ ਇਹ ਵੀ ਪਤਾ ਹੈ ਕਿ ਸਾਡੇ ਵਿਦਵਾਨ ਯਾਦ ਰੱਖਿਓ ਸਾਰੀ ਜਪਜੀ ਸਾਹਿਬ ਦੀ ਬਾਣੀ ਚ ਸਭ ਤੋਂ ਜ਼ਿਆਦਾ ਜੇ ਵੱਖ-ਵੱਖ ਅਰਥ ਕੀਤੇ ਗਏ ਕਿਸ ਤੋਕ ਦੇ ਬਾਕੀਆਂ ਦੇ ਨਹੀਂ ਸਭ ਤੋਂ ਜ਼ਿਆਦਾ ਜਿੱਥੇ ਅਰਥਾਂ ਦਾ ਵਖਰੇਵਾ ਯਾਦ ਰੱਖਿਓ ਬਾਣੀ ਚ ਵਖਰੇਵਾ ਨਹੀਂ ਵਿਦਵਾਨਾਂ ਦੀ ਸੋਚ ਦੇ ਅਨੁਸਾਰ ਕੀਤੇ ਹੋ ਅੱਖਰਾਂ ਦਾ ਅਰਥਾਂ ਦਾ ਜਿਹੜਾ ਵਖਰੇਵਾ ਹੈ ਉਹ ਸੱਚਖੰਡ ਦੀ ਇਸ ਤੋਕ ਵਿੱਚ ਤਿਤੈ ਸੀਤੋ ਸੀਤਾ ਮੈ ਮਾਮਾ ਹੈ ਇਹ ਅਸੀਂ ਨਾਲ ਦੇਖਨੇ ਹੁਣ ਅੱਗੇ ਮੈਂ ਬੇਨਤੀ ਕਰਾਂ ਕੁਛ ਨੇ ਵੀ ਅਰਥ ਕੀਤੇ ਨੇ ਬਖਸ਼ਿਸ਼ ਵਾਲਾ ਜਿਹੜਾ ਖੰਡਕ ਹੈ ਬਾਣੀ ਜੋਰ ਬਾਣੀ ਦਾ ਅਰਥ ਬੋਲ ਜੋਰ ਦਾ ਅਰਥ ਤਾਕਤ ਫਰਕ ਇਹਨਾਂ ਉਹਨਾਂ ਨੇ ਬਾਣੀ ਨੂੰ ਸ਼ਬਦ ਕਹਿ ਦਿੱਤਾ ਹੈ ਤਾਕਤ ਤਾਂ ਹੈ ਕਹਿੰਦੇ ਨੇ ਬਖਸ਼ਿਸ਼ ਵਾਲੇ ਖੰਡ ਵਿੱਚ ਪਹੁੰਚੀਆਂ ਹੋਈਆਂ ਜਿਹੜੀਆਂ ਰੂਹਾਂ ਨੇ ਉਹਨਾਂ ਦੇ ਬੋਲ ਵਿੱਚ ਇੰਨੀ ਕੋ ਤਾਕਤ ਹੈ ਉਹ ਜੋ ਬੋਲ ਦੇਣਗੇ ਨਾ ਇੱਥੇ ਝੂਟਾ ਹੋਣਾ ਨਾ ਰੱਬ ਦੀ ਦਰਗਾਹ ਵਿੱਚ ਝੂਟਾ ਹੋਣਾ ਉਹਨਾਂ ਨੇ ਬਾਣੀ ਦਾ ਅਰਥ ਬੋਲ ਵੀ ਕੀਤਾ ਪਰ ਆਪਾਂ ਜੋ ਅਰਥ ਕਰਨ ਲੱਗੇ ხਾਂ ਕਿ ਕਰਮਖੰਡ ਕੀ ਬਾਣੀ ਜੋਰ ਇਹ ਬਖਸ਼ਿਸ਼ ਵਾਲਾ ਖੰਡ ਜਿਹੜਾ ਹੈ ਇਹ ਤਾਕਤ ਵਾਲਾ ਇਹ ਬਲ ਵਾਲਾ ਹੈ ਤਿੱਥਾ ਹੋਰ ਨਾ ਕੋਈ ਹੋਰ ਜਿਹੜਾ ਬਖਸ਼ਿਸ਼ ਵਾਲੇ ਖੰਡ ਵਿੱਚ ਵਿਚਰ ਰਿਹਾ ਜਿਹਦੀ ਸੂਰਤ ਉਸ ਥਾਂ ਤੇ ਹੈ ਤਿੱਥਾ ਹੋਰ ਨਾ ਕੋਈ ਹੋਰ ਉੱਤੇ ਸੱਚ ਐਵੇਂ ਹੋਰ ਅਰਥ ਅੱਖਰ ਅੱਖਰੀ ਅਰਤੇ ਨੇ ਤਿੱਥੇ ਦਰਤ ਉਥੇ ਚਲੋ ਅਖਰੀ ਅਰਥ ਕਰ ਲਈ ਹੋਰ ਨਾ ਕੋਈ ਹੋਰ ਇੱਥੇ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਕਿਉਂ ਜਿਹੜਾ ਇਸ ਖੰਡ ਵਿੱਚ ਵਰਦ ਹੈ ਸੱਚ ਇਹ ਵੇ ਉਹਦੇ ਅੰਦਰ ਰਾਮ ਤੋਂ ਬਿਨਾ ਨਾਮ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਦੂਜਾ ਫੁਰਨਾ ਦਵੇਸ਼ ਵਾਲਾ ਥਾਂ ਹੀ ਨਹੀਂ ਰੱਖਦਾ ਉਥੇ ਫਿਰ ਬੇਨਤੀ ਕਿਉਂਕਿ ਉਥੇ ਕੋਈ ਹੋਰ ਨਹੀਂ ਫੁਰਨਾ ਹੋਰ ਕੋਈ ਥਾਂ ਨਹੀਂ ਉੱਥੇ ਸੁਰਤ ਵਿੱਚ ਸਿਰਵ ਤੇ ਸਿਰਵ ਕੇਵਲ ਇੱਕ ਰਾਮ ਇੱਕ ਪਰਮੇਸ਼ਰ ਹੈ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਉੱਥੇ ਕੌਣ ਜੀ ਮਹਾਰਾਜ ਕਹਿ ਰਹੇ ਨੇ ਤਿੱਥੈ ਜੋਧ ਜੋਦੇ ਮਹਾਬਲ ਮਹਾਬਲੀ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਤੇ ਤੀਸਰਾ ਸ਼ਬਦ ਵਰਤਿਆ ਸੂਰ ਫਿਰ ਬਿੰਤੀ ਤਿੱਥੇ ਜੋਦ ਮਹਾ ਬਲਸੂਰ ਤਿੱਥੇ ਜੋਦ ਮਹਾਬਲ ਕਠਾ ਪਾਠ ਮਹਾਬਲ ਵਖਰਾ ਨੀ ਕਰਨਾ ਤਿੱਥੇ ਜੋਦ ਮਹਾਬਲਸੂਰ ਉਥੇ ਜੋਦੇ ਨੇ ਮਹਾਬਲੀ ਨੇ ਉਥੇ ਸੂਰਮੇ ਨੇ ਪਰ ਯਾਦ ਰੱਖਿਓ ਇਹ ਕੇਵਲ ਬਾਹੂਬਲੀ ਨਹੀਂ ਡਰਾਉਣ ਵਾਲੇ ਲੋਕਾਂ ਨੂੰ ਨਹੀਂ ਕਿਉਂਕਿ ਉਥੇ ਤਿੰਨ ਮੈਂ ਰਾਮ ਰਹਾ ਭਰਪੂਰ ਇੱਥੇ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਦੀ ਬਾਣੀ ਚ ਜਪਜੀ ਸਾਹਿਬ ਚ ਈਸ਼ਰ ਆਇਆ ਸ਼ਬਦ ਹੁਣ ਤੱਕ ਗੋਰ ਖਾਇਆ ਮਹੇਸ਼ ਆਇਆ ਕਾਨ ਆਇਆ ਗੋਪੀਆਂ ਆਇਆ ਬਰਮਾ ਆਇਆ ਪਰ ਜਪਜੀ ਸਾਹਿਬ ਦੀ ਬਾਣੀ ਵਿੱਚ ਰਾਮ ਸ਼ਬਦ ਇੱਥੇ ਪਹਿਲੀ ਵਾਰ ਆਇਆ ਹੈ ਆਪਾਂ ਵਸਦੇ ਹਾਂ ਰਾਮ ਸ਼ਬਦ ਪਹਿਲੀ ਵਾਰ ਇੱਥੇ ਆਇਆ ਹੈ ਤਿਨ ਮੈਂ ਰਾਮ ਰਹਾ ਭਰਪੂਰ ਤਿਨ ਮੈਂ ਜਿਹੜੇ ਕਰਮਖੰਡ ਵਿੱਚ ਨੇ ਤਿਨ ਮੈਂ ਜਿਨ੍ਹਾਂ ਦੇ ਅੰਦਰ ਕੋਈ ਹੋਰ ਨਹੀਂ RAM ਰਹਾ ਭਰਪੂਰ ਇੱਥੇ RAM ਦਾ ਅਰਥ ਸਰਬ ਵਿਆਪਕ ਰਮਿਆ ਹੋਇਆ ਜਿਹਨੂੰ ਏਕ ਓੰਕਾਰ ਕਿਹਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਵਰ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ ਇਹਨਾਂ ਜੋਧ ਮਹਾ ਬਲਸੂਰ ਜਿਹੜੇ ਨੇ ਤਿੰਨ ਵਿੱਚ RAM ਰਹਾ ਭਰਪੂਰ ਭਰਪੂਰ ਆਪਾਂ ਕਿਹਨੂੰ ਕਹਿੰਨੇ ਤਿੱਥਾ ਹੋਰ ਨਾ ਕੋਈ ਹੋਰ ਦੇ ਅਰਥ ਹੋ ਰਹੇ ਜੇ ਭਰਪੂਰ ਕਹਿੰਨੇ ਜਿਵੇਂ ਕੋਈ ਚੀਜ਼ ਚੰਗੀ ਤਰ੍ਹਾਂ ਭਰੀ ਜਾਏ ਤੇ ਸੱਚ ਐਵੇਂ ਤਿਲ ਜਿੰਨੀ ਵੀ ਥਾਂ ਨਾ ਰਹੇ ਆਪਾਂ ਕਹਿੰਦੇ ਨਹੀਂ ਨਹੀਂ ਆਹ ਕਮਰਾ ਤੇ ਭਰਪੂਰ ਹੋ ਗਿਆ ਹੈ ਸਮਝ ਲੈ ਨਾ ਇਹ ਸਰੋਵਰ ਭਰਪੂਰ ਹੋ ਗਿਆ ਭਰਿਆ ਗਿਆ ਇਹ ਫਿਰ ਸੁਣੋ ਭਰਪੂਰ ਦਾ ਅਰਥ ਉਹ ਮਹਬਲੀ ਸੂਰਮੇ ਜਿਨ੍ਹਾਂ ਅੰਦਰ ਰਾਮ ਵਸ ਰਿਹਾ ਹੈ ਪਰਮਾਤਮਾ ਵਸ ਰਿਹਾ ਹੈ ਪਰਮਾਤਮਾ ਤੋਂ ਬਿਨਾ ਇੱਕ ਖਿੰਨ ਜਿੰਨਾ ਵੀ ਕੋਈ ਥਾਂ ਨਹੀਂ ਜਿਸ ਦੂਜੇ ਰੂਥਾਂ ਮਿਲ ਸਕੇ ਫਿਰ ਅਰਥ ਕਰਮਖੰਡ ਕੀ ਬਾਣੀ ਜੋਰ ਤਿੱਥਾ ਘੋਰ ਨਾ ਕੋਈ ਹੋਰ ਬਖਸ਼ ਜਦੇ ਖੰਡ ਵਾਲੀ ਬਾਣੀ ਤਾਕਤ ਵਾਲੀ ਹੈ ਬਨਾਵਟ ਉੱਥੇ ਹੋਰ ਕੋਈ ਨਹੀਂ ਸਿਰਫ ਉੱਤੇ ਤਿੱਥਾ ਜੋਦ ਮਹਾਬਲਸੂਰ ਜੋਦੇ ਨੇ ਸੂਰਮੇ ਨੇ ਮਹਬਲੀ ਨੇ ਕੌਣ ਤਿੰਨ ਮੈਂ ਰਾਮ ਰਹਾ ਭਰਪੂਰ ਉਹਨਾਂ ਦੇ ਅੰਦਰ ਸਾਰਾ ਸਾਰਾ ਸ਼ਰੀਰ ਉਹਨਾਂ ਦੀ ਸੁਰਤ ਸੱਚ 에 रब तो बिना कुछ ਨਹੀਂ ਪ੍ਰਮਾਤਮਾ ही ਪਰੀਪੂਰਨ है। ਹੁਣ थोड़ी ਜਿ ਇੱਥੇ ਰੋਕ ਕੇ ਦੇ ਅਰਥ ਬਹੁਤ ਜ਼ਰੂਰੀ ਨੇ ਜੋਦ ਦੇ ਸੂਰੇ ਤੇ ਮਹਾਬਲੀ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੂਰਮਾ ਸ਼ਬਦ ਦੀ ਵਰਤੋਂ ਕੀਤੀ ਹੈ ਜੋਦ ਸ਼ਬਦ ਅਸੀਂ ਪੜਿਆ ਹੈ ਗੁਰੂ ਸਾਹਿਬ ਜੀ ਨੇ ਅਸੀਂ ਬਾਹਰ ਮੁਖੀ ਜਦੋਂ ਗੱਲ ਕਰਾਂਗੇ ਬਜ਼ੁਰਗੋ ਸੁਣ ਲਓ ਤੁਸੀਂ ਜੇ ਨਹੀਂ ਸੁਣਨਾ ਪਲੀਜ਼ ਬਾਹਰ ਚਲੇ ਜਾਓ ਥੋੜੀ ਜੀ ਬੇਨਤੀ ਹੈ ਮੈਂ ਡਿਸਟਰਬ ਨਾ ਹੁਣ ਜਿੱਥੇ ਸ਼ਬਦ ਸੂਰਮਾ ਹੈ ਉਥੇ ਇੱਕ ਸ਼ਬਦ ਅਸੀਂ ਆਮ ਤੌਰ ਤੇ ਕਹਿੰਦੇ ਆ ਬਾਹਰ ਮੁਖੀ ਸੂਰਮਾ ਗੁਰੂ ਸਾਹਿਬ ਨੇ ਜਦੋਂ ਸੂਰਮੇ ਦੀ ਗੱਲ ਕੀਤੀ ਇੱਕ ਮੁਖੀ ਨਹੀਂ ਉਹਨਾਂ ਅੰਦਰੂਨੀ ਸੂਰਮਾ ਵੀ ਤੇ ਬਾਹਰੂਨੀ ਸੂਰਮਾ ਵੀ ਕਿਹਾ ਹੈ ਜਿਵੇਂ ਇੱਕ ਪਾਠ ਕਰਨਿਆ ਜਾ ਕੋ ਘਰ ਰੰਗ ਲਾਗੋ ਇਸ ਯੁੱਗ ਮੈਂ ਥੋੜਾ ਜਿਹਾ ਸ਼ਬਦ ਸੂਰ ਮਹਾਬਲੀ ਤੇ ਜੋੜਾ ਇੱਥੇ ਖਰ ਰੰਗ ਦਾ ਅਰਥੇ ਪਰਮਾਤਮਾ ਦੇ ਪ੍ਰੇਮ ਦਾ ਨਾਮ ਦਾ ਰੰਗ ਲੱਗ ਗਿਆ ਜਾਂਕੋ ਖਰ ਰੰਗ ਲਾਗੋ ਇਸ ਯੁੱਗ ਮੈਂ ਇਸ ਦੁਨੀਆ ਵਿੱਚ ਇਸ ਸੰਸਾਰ ਵਿੱਚ ਮਹਾਰਜ ਕਹਿੰਦੇ ਅਸਲ ਚੋਂ ਸੂਰਮਾ ਕਿਹਾ ਜਾਂਦਾ ਹੈ ਥੋੜੇ ਸਭ ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋਕਈਤ ਕਹੇ ਸੂਰਾ ਪਰ ਅਗਲੀ ਜਿਹੜੀ ਸ਼ਬਦ ਕਹੇ ਆਤਮ ਜਿਣੇ ਜਿਨੇ ਤੁਰ ਅੰਤਰ ਆਤਮੇ ਤੋਂ ਆਪਣੇ ਆਪ ਨੂੰ ਜਿੱਤਿਆ ਹੋਇਆ ਸੂਰਮਾ ਮੈਂ ਅਰਜ਼ ਕਰਾਂਗਾ ਜੀ ਸਿਰਫ ਇਹ ਜ਼ਰੂਰੀ ਸੀ ਜੀ ਕਿਉਂਕਿ ਅਸੀਂ ਬਾਹਰ ਮੁਕੀ ਸੂਰਮੇ ਦੀ ਗੱਲ ਤੇ ਪੁੱਛੋ ਕੋਈ ਨਾ ਜਕਾਰੇ ਤੇ ਜਕਾਰੇ ਛੱਡਨੇ ਆ ਪਰ ਕੀ ਪਤਾ ਅੰਦਰ ਦਾ ਸੂਰਮਾ ਕੌਣ ਲੱਗੇ ਇੱਕ ਬੰਦਾ ਕਿਸੇ ਨੂੰ ਫਿਜ਼ੀਕਲ ਤੌਰ ਤੇ ਮਾਰ ਸਕਦਾ ਪਰ ਚੇਤੇ ਰੱਖਿਓ ਕਿਸੇ ਦੂਜੇ ਨੂੰ ਮਾਰਨ ਵਾਲਾ ਆਪਣੇ ਮਨ ਤੋਂ ਹਾਰ ਸਕਦਾ ਹੈ ਆਪਣੀਆਂ ਇਛਾਵਾਂ ਤੋਂ ਹਾਰ ਸਕਦਾ ਸੂਰਮ ਗਤੀ ਕੈਸੀ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਈਤ ਕੈ ਸੂਰਾ ਆਤਮ ਜਿਣੈ ਸਗਲ ਵਸ ਤਾ ਕਰ ਜਾਕਾ ਸਤਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਨੀ ਪਾਵਨ ਨਾਮ ਧਾਵਣ ਸਹਿਜ ਸਮਾਵਣ ਸੰਗ ਜਿਹੜੇ ਉਸ ਸਮਾਗੈ ਇੱਥੇ ਕਿਹਾ ਸੂਰਮਾ ਇੱਕ ਹੋਰ ਸ਼ਬਦ ਕੈ ਵਿੱਚੋਂ ਮੈਂ ਤੋਕਲੀ ਨਾਨਕ ਸੋ ਸੂਰਾ ਬਰੀਆਮ ਇੱਥੇ ਜੋਧ ਮਹਾ ਬਲਸੂਰ ਨਾਨਕ ਸੋ ਸੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਦੀਆਂ ਜੜਾਂ ਪੱਟ ਕੇ ਛੜ ਦਿੱਤੀਆਂ ਗੁਰੂ ਨਾਨਕ ਸਾਹਿਬ ਕਹਿੰਦੇ ਸੱਚ ਇਹ ਵੇ ਬੜਾ ਵੱਡਾ ਸੂਰਮਾ ਹੈ ਜਿਨੇ ਖੰਕਾਰ ਛੱਡ ਦਿੱਤਾ ਇੱਕ ਹੋਰ ਬਚਨ ਮਹਾਰਾਜ ਦਾ ਥੋੜੇ ਜੇ ਇੱਕ ਸ਼ਬਦ ਉਹਨਾਂ ਨਾਣਾ ਹਜ਼ੂਰ ਨੇ ਕਿਹਾ ਰਣ ਰੂਤੋ ਰਹਿ ਜਿਹੜਾ ਬੰਦਾ ਸੂਰਮਾ ਰਣ ਦੇ ਤੱਤੇ ਦੇ ਵਿੱਚ ਰੁੱਝਿਆ ਹੋਇਆ ਹੈ ਸੱਚ ਐਵੇਂ ਨਾ ਉਹ ਝੁਕਦਾ ਹੈ ਨਾ ਉਹ ਸਮਝੌਤਾ ਕਰਦਾ ਹੈ ਨਾਣਾ ਨਰ ਨੇਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਨਾ ਝੁਕ ਰਿਹਾ ਨਾ ਸਮਝੌਤਾ ਕਰ ਰਿਹਾ ਇਹਦਾ ਮਤਲਬ ਕੀ ਕਿ ਉਹ ਅੰਦਰੋਂ ਇੰਨਾ ਕੁ ਅਡੋਲ ਹੈ ਜਿਹੜਾ ਰਣ ਤੱਤੇ 'ਚ ਜੂਝ ਰਿਹਾ ਇੱਥੇ ਰਣ ਤੱਤੇ ਦਾ ਅਰਥ ਕੇਵਲ ਬਾਹਰਮਖੀ ਨਹੀਂ ਕਰਨਾ ਮੈਂ ਆਪ ਨੂੰ ਫਿਰ ਕਰਾਂਗਾ ਬੇਨਤੀ ਦੁਬਾਰਾ ਕਿ ਗੁਰਮਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਦਾ ਮਤਲਬ ਕੇਵਲ ਤੁਸੀਂ ਸੰਗਤ ਨਹੀਂ ਮੈਂ ਵੀ ਸ਼ਬਦ ਵਿੱਚ ਡੁੱਬ ਕੇ ਵੇਖੀਏ ਅਸੀਂ ਗੁਰਦੁਆਰਿਆਂ ਵਿੱਚ ਗੁਰਮਤ ਦੇ ਸ਼ਬਦਾਂ ਦੀ ਉਹ ਵਿਆਖਿਆ ਕਰਨੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਮੇਲ ਨਹੀਂ ਖਾਂਦੀ ਬੇ ਸ਼ਬਦਾਂ ਦਾ ਅਰਥ ਗੁਰੂ ਅੰਸਦ ਮੈਂ ਕੁਝ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਕੁਝ ਕਹਿ ਰਿਹਾ ਹੁਣ ਆ ਜਿਹੜਾ ਸ਼ਬਦ ਦੇ ਨਾਮ ਨਿਵੇ ਨਾ ਫੁਨ ਸੰਚਰੇ ਕਿ ਆਤਮਿਕ ਸੂਰਮਾ ਨਾ ਤਾਂ ਵਕਾਰਾਂ ਤੇ ਵਾਸ਼ਨਾ ਅੱਗੇ ਆਪਣੇ ਆਪ ਨੂੰ ਝੁਕਾਂਦਾ ਤੇ ਦੂਜੀ ਗੱਲ ਨਾ ਫਿਰ ਇਹਨਾਂ ਨਾਲ ਸਮਝੌਤਾ ਕਰਦਾ ਸਮਝੌਤਾ ਕਰਨ ਦਾ ਯਤਨ ਵੀ ਕਰਦਾ ਨਹੀਂ ਉਹ ਝੁਕਦਾ ਵੀ ਨਹੀਂ ਸੂਰਮਾ ਹੋਵੇ ਜਿਹੜਾ ਅਡੋਲ ਹੋ ਕੇ ਸ਼ਬਦ ਦੀ ਕਮਾਈ ਨਾਲ ਇਹਨਾਂ ਪੰਜਾਂ ਦਾ ਮੁਕਾਬਲਾ ਕਰਦਾ ਇਸ ਸੂਰਮੇ ਕੇਵਲ ਬਾਹਰमुखी ਨਹੀਂ ਇਹ ਤੁਰ ਅੰਦਰ ਤੋਂ ਅੱਗੇ ਮਬਾਨੀ ਚੋਂ ਬੇਨਤੀ ਕਰਾਂਗਾ ਬਾਹਰमुखी ਤੇ ਅੰਦਰੂਨੀ ਸੂਰਮਾ ਇਹਦੀ ਵੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਇੱਕ ਸ਼ਬਦ ਪੜਿਆ ਜਾਂਦਾ ਮਾਰੂ ਰਾਗ ਚ ਗगन दमामा ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਅਗਲੇ ਸ਼ਬਦ ਨੇ ਸੋਰਾ ਸੋ ਪਹਿਚਾਨੀਐ जो ਲਰੈ दीन के ਹੇਤ purja purja kat marai कबू न chade khet char tukane te kabir sahib ji da vachan hai te menu inna pata hai ke sade bau ginti ch vai guru bau ginti ch sirb te sirb sangat nu inni koi gal puch lo e kehnege purja purja kat marai kabu na chade ਗੁਰਮਖੋ ਇਸ ਸੂਰਮੇ ਆ ਪੜੇ ਨੇ ਇੱਥੇ ਇਹ ਬਖਸ਼ਿਸ਼ ਵਾਲੇ ਖੰਡ ਚ ਵਿਚਰ ਰਹੇ ਆ ਗगन ਦਮਾਮਾ ਬਾਜਿਓ ਗगन ਦੇ ਲਫ਼ਜ਼ੀ ਅਰਥ ਆਕਾਸ਼ ਹੈ ਅਸਮਾਨ ਹੈ ਪਰ ਇੱਥੇ ਸਭ ਆਤਮ ਅਭਿਆਸੀਆਂ ਨੇ ਅਰਥ ਕੀਤੇ ਗगन ਦਾ ਅਰਥ ਤੇ ਦਸਮ ਦਵਾਰਾ ਫਿਰ ਅਰਜ਼ ਗगन ਦਸਮ ਦਵਾਰ ਉੱਥੇ ਦਮਾਮਾ ਦਮਾਮੇ ਦਾ ਲਫ਼ਜ਼ੀ ਅਰਥ ਨਗਾਰਾ ਸੱਚ ਏਵੇਂ ਕੇ ਜਿਨਨੇ ਆਪਣੀਆਂ ਆ ਨੌ ਮੋਰੀਆਂ ਨੂੰ ਆਪਣੇ ਸ਼ਰੀਰ ਦੇ ਇਹਨਾਂ ਨੌ ਦਰਵਾਜ਼ਿਆਂ ਨੂੰ ਕੁੱਟ ਕੇ ਬੰਦ ਕਰ ਦਿੱਤਾ ਸੱਚ ਏਵੇਂ ਕਿ ਉਹਦੀ ਸੂਰਤ ਦਸਮ ਵਿੱਚ ਪਹੁੰਚੀ ਲੋਕੋ ਉਹ ਸੂਰਮਾ ਹੁਣ ਉੱtreਗਾ ਇਸ ਰਣ ਮੰਡਲ ਵਿੱਚ ਇਸ ਰਣ ਤੱਤੇ ਵਿੱਚ काम ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿਨ ਰਾਤ ਸਭ ਦਾ અપਮਾਨ ਕਰਦੇ ਨੇ ਜਿਹਦੇ ਦਸ਼ਮ ਦਵਾਰ ਵਿੱਚ ਆਨੰਦ ਦਾ ਨਗਾਰਾ ਵੱਜ ਜਾਏ ਉਹ ਫਿਰ ਰੱਬ ਦੀ ਕਿਰਪਾ ਨਾਲ ਇਹਦਾ ਮੁਕਾਬਲਾ ਕਰਦਾ ਹੈ ਮੈਂ ਫਿਰ ਰੀਪੀਟ ਕਰਾਂਗਾ ਗगन दमामा बाजियो ਦਸ਼ਮ ਦਵਾਰ ਚ ਉਹ ਨਗਾਰਾ ਵੱਜਿਆ ਪਰਿਓ ਨਿਸ਼ਾਨੇ ਘਾਓ ਉਹਨੇ ਤੁਰ ਖਿਰਦੇ ਦੇ ਵਿੱਚ ਘਾ ਕਰ ਦਿੱਤਾ ਜ਼ਖਮ ਕਰ ਦਿੱਤਾ ਟਿਕਾਣੇ ਤੇ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਇਹ ਨੇ ਤਿੱਥੇ ਜੋਧਾ ਮਹਾਬਲਸੂਰ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਹੁਣ ਆਪਾਂ ਕਾਂਗੇ ਜੀ ਇਹਦਾ ਮਤਲਬ ਕਮਜ਼ੋਰ ਬਿਲਕੁਲ ਨਹੀਂ ਮੈਂ ਆਪ ਨੂੰ ਫਿਰ ਅਰਜ਼ ਕਰਾਂਗਾ ਦੋਨੋਂ ਪੱਖ ਜੋੜ ਕੇ ਹੁਣ ਅੰਦਰੋਂ ਜਿੱਤਦਾ ਪਿਆਉ ਇਕਬੀਰ ਸਾਹਿਬ ਦਾ ਬਚਨ ਹੈ ਮੇਰੇ ਮਨ 'ਚ ਅੱਜ ਵੀ ਆਇਆ ਕਿ ਕਬੀਰ ਸਾਹਿਬ ਬੜੀ ਜੰਗ ਦੀ ਗੱਲ ਕਰਦੇ ਆ ਆ ਜਿਹੜਾ ਸ਼ਬਦ ਹੈ ਨਾ ਕਿ ਐਸੀ ਮਰਨੀ ਜੋ ਮਰੈ ਬਹੋਰ ਨਾ ਮਰਨਾ ਹੋਵੇ ਕਬੀਰ ਜੀ ਦਾ ਆ ਜਿਹੜਾ ਸ਼ੀਧੀ ਵੇਲੇ ਪੜਿਆ ਜਾਂਦਾ ਅਬ ਤੋਂ ਜਰਹ ਮਰੈ ਸਿਧ ਪਾਈਐ ਲੀਨੂ ਖਾਤ ਸੰਧੋਰਾ ਇਹ ਵੀ ਕਬੀਰ ਜੀ ਦਾ ਹੈ ਜਿਹੜਾ ਇਹ ਸ਼ਬਦ ਪੜਿਆ ਜਾਂਦਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਇਹ ਵੀ ਕਬੀਰ ਜੀ ਦਾ ਹੈ ਜਿਹੜੇ ਅਸੀਂ ਇਹ ਬਚਨ ਪੜ੍ਹਨੇ ਆ ਉਹਨਾਂ ਦੇ ਮੋਏ ਮਰਨੇ ਦਾ ਚਾਉ ਹੈ ਇਹ ਵੀ ਕਬੀਰ ਜੀ ਦਾ ਹੈ ਕਬੀਰ ਜਾਨ ਦਿਨ ਖੌਮੂਵਾ ਪਾਛੈ ਬਿਆ ਆਨੰਦ ਇਤੇ ਖੌਮੂਵਾ ਦਾ ਅਰਥ ਤਿੱਥਾ ਹੋਰ ਨਾ ਕੋਈ ਹੋਰ ਫਿਰ ਅਬ ਸੁਣਿਓ ਕਬੀਰ ਜਾਨ ਦਿਨ ਖੌਮੂਵਾ ਪਾਛੈ ਬਿਆ ਆਨੰਦ ਕਰਾਂ ਆਨੰਦ ਸਚਾ ਮਨ ਕਹਿੰਦੇ ਨੇ ਜਿਸ ਦਿਨ ਦੀ ਮੇਰੇ ਅੰਦਰੋਂ ਖੌਮੇ ਮਰ ਗਈ ਖੌ ਦਾ ਅਰਥ ਈਗੋ ਹੰਕਾਰ ਮਰ ਗਿਆ ਸੱਚ ਐਵੇਂ ਉਸ ਦਿਨ ਤੋਂ ਬਾਅਦ ਆਨੰਦ ਆ ਗਿਆ ਆਮ ਬੰਦਾ ਮਰਦਾ ਤੇ ਲੋਕ ਅਫਸੋਸ਼ ਕਰਨ ਆਉਂਦੇ ਆ ਕਹਿੰਦੇ ਜਿਸ ਦਿਨ ਮੈਂ ਮੇਰੀ ਮਰ ਗਈ ਉਸ ਦਿਨ ਮੇਰੇ ਅੰਦਰ ਦੇ ਇੰਦਰੇ ਵੀ ਮੇਰੇ ਸਾਥ ਹੀ ਮੇਰੇ ਨਾਲ ਰੱਬ ਦੇ ਗੀਤ ਗਾਉਣ ਲੱਗ ਪਏ ਇਹ ਪੂਰਾ ਸ਼ਲੋਕ ਕਿ ਕਬੀਰ ਜਾਨ ਦਿਨ ਖਉਮ ਹੁਆ ਪਾਛੇ ਭਇਆ ਆਨੰਦ ਮੋਇ ਮਿਲੇ ਪ੍ਰਭ ਆਪਣਾ ਸੰਗੀ ਆ ਅੱਖਾਂ ਆ ਕੰਨ ਆ ਜੀਵ ਸੰਗੀ ਭਜੈ ਗੋਬਿੰਦ ਕਿਉਂਕਿ ਇਸ ਨੂੰ ਹੋਰ ਕਿਸੇ ਨੂੰ ਇੱਥੇ ਥਾਂ ਹੀ ਨਾ ਕਿ ਅਰ ਸੁਣਿਓ ਜਿਹੜੀ ਮੈਂ ਬੇਨਤੀ ਕਰ ਲਗਾ ਕਿ ਇੱਕ ਅੰਦਰ ਕਿਵੇਂ ਜਿੱਤਿਆ ਜਾ ਸਕਦਾ ਹੈ ਬਾਬਾ ਜੀ ਨੇ ਇੱਕ ਸ਼ਬਦ ਵਰਤਿਆ ਮਨ ਜੀਤੈ ਜਗ ਜੀਤ ਇਹ ਸੂਰਮੇ ਨੇ ਇੱਥੇ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਸ਼ਬਦ ਥੋੜਾ ਜ੍ਹਾ ਲੰਬੇਰਾ ਹੈ ਮਹਿੰਗਾ ਹੈ ਮੈਂ ਸਿਰਫ ਅਰਥ ਕਰਨੇ ਚਾਹਾਂਗਾ ਕਿਹੜੇ ਸੂਰਮੇ ਤਿੱਥੇ ਜੋਦ ਮਹਾਬਲ ਸੂਰ ਉਹ ਸ਼ਬਦ ਹੈ ਕਿਉਂ ਲੀਜਿਆ ਗੜ ਬੰਕਾ ਭਾਈ ਦੋ ਵਰ ਕੋਟਰ ਤੇ ਵਰ ਖਾਈ 525 ਮੁਹੰਮਦ ਮਦਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਾਹ ਕਰੂੰ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤੈ ਮਨ ਮਾਵਾਸੀ ਰਾਜਾ ਉਸ ਦੇ ਵਿੱਚ ਮਹਾਰਾਜ ਨੇ ਸਾਰਾ ਦੱਸਿਆ ਕਿ ਅੰਦਰ ਵਾਲਾ ਮਨ ਇਹ ਸ਼ਰੀਰ ਕਿਲਾ ਹੈ ਮਾਨੇ ਦੇ ਵਿੱਚ ਬੈਠਾ ਹੈ ਕਾਬੂ ਕਰਨਾ ਚਾਹਨਾ ਕਾਮ ਦੇ ਖਿੜਕ ਲੱਗੇ ਨੇ ਦੁੱਖ ਸੁੱਖ ਇਹਦਾ ਪਹਿਰਾਪੇ ਦਿੰਦੇ ਨੇ ਜਦੋਂ ਇਹਦੇ ਬੂਵੇ ਖੁੱਲਦੇ ਨੇ ਜਾਂ ਪਾਪ ਕਰਦੇ ਨੇ ਤੇ ਜਾਂ ਪੁੰਨ ਕਰਦੇ ਨੇ ਕਾਮ ਕੇ ਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ ਕਰੋਧ ਪ੍ਰਧਾਨ ਮਹਾ ਬਦੁੰਦਰ ਤੈ ਮਨ ਮਾਵਾਸੀ ਰਾਜਾ ਸਵਾਦ ਸਨਾਹ ਆ ਬੁਲਟ ਪ੍ਰੂਫ ਜੈਕਟ जीप ਦਾ ਸਵਾਦ ਇੰਦਰੀਆਂ ਦਾ ਚਸਕਾ ਸੰਜੋਗ ਹੈ ਜਿਹੜਾ ਨਾਮ ਦੇ ਤੀਰ ਵੱਜਣ ਹੀ ਨਹੀਂ ਦਿੰਦਾ ਪਿਆ ਵੱਜਣ ਦਿੰਦਾ ਨਹੀਂ ਟੋਪ ਮਮਤਾ ਕੋ ममता ਮੇਰੀ ਮਮਤਾ ਦਾ ਟੋਪੀ ਪਾਈਏ ਸਿਰ ਤੇ ਛੱਟ ਨਾ ਵੱਜ ਜਾ ਟੋਪ ਦਾ ਅਰਥ ਗੁਰਮੁਖੋ ਮੈਂ ਟੋਪੀ ਸ਼ਬਦ ਕਹਿ ਦਿੰਦਾ ਸੱਚੀ ਲੋ ਕਈ ਵਰੀ ਕਿਸ ਕਹਿੰਦੇ ਹੁੰਦੀ ਵਾਰ-ਵਾਰ ਐਕਸਪਲੇਨ ਕਿਉਂ ਕਿਉਂਕਿ ਕਰੀਏ ਕੀ ਹੈ ਜਿਸਪਸ਼ਟੀਕਰਨ तो ਬਿਨਾ ਤਾਂ ਡਰ ਲੱਗਦਾ ਗੁਰਦੁਆਰੇ 'ਚ ਨਹੀਂ ਵੜਨ ਦੇ ਡਾਕ कई ਕਈ पहले ਪਹਿਲੇ ਕਹਿੰਦੇ ਦਫ਼ਤਰ के ਬੈ ਕੇ ਸਾਨਾ ਗੱਲ ਕਰ ਲਿਓ ਫਿਰ ਕਤਾ ਸ਼ੁਰੂ ਕਰਿਓ। ਮੈਂ ਕਿਹਾ ਵਾਹ ਕੌਮ ਦੇ ਭਾਗ। ਸੱਚ ਐਵੇਂ ने ਨੇ ਕਦੀ ਜਪਜੀ ਸਾਹਿਬ ਨੇ ਪੜਿਓ ਪ੍ਰਚਾਰਕਾਂ ਦੀ ਕੁਰਸੀ ਤੇ ਬੈ ਕੇ ਇੰਟਰਵਿਊ ਲੈਂਦੇ ਹੁੰਦੇ ਨੇ। ਕੀ ਬੋਲੋਗੇ ਜੀ ਤੁਸੀਂ? ਹੁਣ ਆ ਜਿਹੜਾ ਟੋਪ ਅਕਸਰ ਲੋਹੇ ਦਾ ਪਾਉਂਦੇ ਨੇ ਉੱਤੇ ਸਰਦਾਰ ਸਿਪਾਹੀ ਦੀ ਗੱਲ ਨਹੀਂ ਮੈਂ ਕਰ ਰਿਹਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤ੍ਰਿਸ਼ਨਾ ਤੀਰ ਰਹਿ ਘਟ ਭੀਤਰ ਇਉਂ ਗੱਲ ਲਿਓ ਨਾ ਜਾਈ ਅੱਗੇ ਫਿਰ ਭਗਤ ਜੀ ਕਹਿੰਦੇ ਆ ਪਤਾ ਕਿਹੜੇ ਸੂਰਮੇ ਪ੍ਰੇਮ ਪਲੀਤਾ ਸੁਰਤ ਗੋਲੀ ਡਾਗਣ ਲੱਗਿਆਂ ਵਰਦੇ ਸਨ ਤੋਪ ਚਲਾਣ ਲੱਗਿਆ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿੱਥੇ ਜੋਧ마 ਬਲਸੂਰ ਕਰਮ ਖੰਡ ਚ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿਜੇ ਪਰਜਾਲੀ ਇਕਹਿ ਚੋਟ ਸਜਾਇਆ ਸਤ ਸੰਤੋਖ ਲੈ ਲਰਨੇ ਲੱਗਾ ਤੋਰੇ ਦੋਇ ਦਰਵਾਜਾ ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਅਗਲੇ ਬਚਨ ਭਗਵਤ ਪੀਰ ਮਨ ਕਾਬੂ ਕਰ ਲਿਆ ਸ਼ਕਤ ਸਿਮਰਨ ਕੀ ਕਟੀ ਕਾਲ ਪੈ ਫਾਂਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸ਼ੀ ਪਿਆਰਿਓ ਕਹਿੰਦੇ ਉੱਥੇ ਪਹੁੰਚ ਗਿਆ ਜਿਸ ਰਾਜ ਨੂੰ ਕੋਈ ਖੋ ਸਕਦਾ ਕੀ ਨਿਕ ਨਾ ਫਿਰ ਬੇਨਤੀ ਕਰਾਂ ਜੀ ਗगन دماਮਾ ਬਾਜਿਓ ਅੰਦਰ ਅਨੰਦ ਨਾਦ ਵਜਿਆ ਦਸਮ ਦਵਾਰ ਚ ਖਿਰਦੇ ਦੇ ਉੱਤੇ ਘਾਓ ਬਣ ਗਿਆ ਪੂਰਾ ਫਿਰ ਉਹ ਸੂਰਮਾ ਕਹਿੰਦਾ ਹੁਣ ਕੱਲਾ ਨਹੀਂ ਆਪਾਂ ਲੜਾਂਗੇ ਫਿਰ ਬੇਨਤੀ ਅੰਦਰ ਨਾਲ ਲੜਨਾ ਬੜਾ ਮੁਸ਼ਕਲ ਜੇ ਬਾਹਰ ਦੀ ਬੇਇੱਜ਼ਤੀ ਇੱਕ ਬੰਦਾ ਕਰਦਾ ਓਦੋਂ ਬਾਅਦ ਉਹਨੂੰ ਲੋਕ ਬੁਲਾਣਾ ਛੱਡ ਦਿੰਦੇ ਆ ਤੇ ਅੰਦਰ ਕਾਮਕ੍ਰੋਧ ਰੋਜ਼ ਰੱਜ ਕੇ ਬੇਇੱਜ਼ਤੀ ਕਰਦਾ ਬੰਦਾ ਫਿਰ ਉਹਨਾਂ ਦੇ ਧਰਲੇ ਕਰੀ ਜਾਂਦਾ ਜੇ ਇੰਨੀ ਅਣਖ ਇਹਨਾਂ ਨਾਲੀ ਮੁਕਾਬਲਾ ਕਰਖਾਂ फिर सुनयो अंदर ਦਾ ਕਿਸੇ ਨੂੰ ਪਤਾ ਨਹੀਂ ਬਾਹਰੋਂ ਮੰਨ ਲਓ बाप ਭੈਣ ਭਰਾ एक ਰਿਸ਼ਤੇਦਾਰੀ ਕੋਈ ਥੋੜਾ ਜਿਹਾ ਅਪਮਾਨਜਨਕ ਸ਼ਬਦ ਬੋਲਦਾ ਕਹਿੰਦਾ ਨਹੀਂ ਨਹੀਂ ਅੱਜ ਤੋਂ ਬਾਅਦ ਮੈਂ ਇਸ ਬੰਦੇ ਦੇ ਮੂੰਹ ਨਹੀਂ ਲੱਗਣਾ ਤੇ ਤੇਰੀ ਅੰਦਰ ਰੋਜ ਬੇਇੱਜ਼ਤੀ ਰੱਜ ਕੇ ਕਰਦੇ ਨੇ ਤੇ ਰੋਜ ਮੂਲਾ ਕਿਣਾ ਘੜੀ ਪਿੱਛੋਂ ਲੱਗਣਾ ਸੂਰਮਾ ਤਾਂ ਹੈ ਜਿਹਨਾਂ ਨੂੰ ਕਾਬੂ ਕਰ ਮਾਰੇ ਨਹੀਂ ਸ਼ਬਦ ਵਰਤੇ ਗਗੰਦ ਮਾਮਾ ਬਾਜੀਓ ਫਿਰ ਉਹ ਸੂਰਮਾ ਜਿਹੜਾ ਅਨਹਦ ਨਾਦ ਆਤਮਕਵਸਤਾ ਵਿੱਚ ਕਰਮਖੰਡ ਵਿੱਚ ਪਹੁੰਚ ਗਿਆ ਉਹ ਫਿਰ ਸ਼ਰੀਰ ਤੋਂ ਉੱਪਰ ਉੱਠ ਕੇ ਪਰਪਕਾਰ ਦੀ ਖਾਤਰ ਕਹਿੰਦੇ ਨੇ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਥ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਉਹ ਆਪਣੇ ਅਕੀਦੇ ਤੋਂ ਪਛਾਨੀ ਘੱਟਦਾ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਅਸਲ ਚ ਕੀ ਹੈ ਕਿ ਇਹ ਜਿਹੜੇ ਜੋਧ ਮਹਾ ਬਲਸੂਰ ਸ਼ਬਦ ਗੁਰੂ ਜੀ ਨੇ ਵਰਤੇ ਇਹ ਦਰਅਸਲ ਉਸ ਆਤਮਕ ਮੰਡਲ ਵਿੱਚ ਉਹ ਆਤਮਕ ਜੇਤੂ ਸੂਰਮੇ ਨੇ ਇਹਨਾਂ ਦੀ ਜ਼ਬਾਨ 'ਚ ਵੀ ਬੜੀ ਤਾਕਤ ਹੈ ਉਹਦੀ ਬੋਲ ਨੂੰ ਰੱਬ ਵੀ ਕਦੀ ਝੂਠੀਆਂ ਨਹੀਂ ਪੈਣ ਦਿੰਦਾ ਤੇ ਸੱਚੇ ਐਸੇ ਸੂਰਮੇ ਜਦੋਂ ਬਾਹਰमुखी ਤੁਰਦੇ ਆ ਮੈਨੂੰ ਵਿੱਚ ਫਿਰ ਵਰਤਨ ਲੱਗਾ ਬਾਹਰमुखी ਚਲੋ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇ ਦੇਣਾ ਕਜਿ ਸ਼ੀਰਦਾਂ ਦੀ ਗੱਲ ਕਰਨੀ ਹੈ ਹਨਾ ਜਿਹੜਾ ਸੱਚਮੁੱਚ ਇੰਨੀ ਅਬਿਹਾਸੀਖ ਹੈ ਅੰਦਰੋਂ ਜਿੱਤੇ ਹੈ ਜੇ ਇਹ ਕਈ ਇਹ ਵੀ ਘਰੋਂ ਉੱਠਿਆ ਮਰ ਜਾਣਾ ਮਰਨਾ ਕੇਵਲ ਮੰਜ਼ਲ ਨਹੀਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਨਾ ਭਿੜ ਮਰੇ ਭਿੜ ਸੂਰ ਜੇ ਸਿਰਫ ਤੋਈ ਕਹਿ ਮੈਂ ਫਲਾਣੇ ਬੰਦੇ ਨੂੰ ਮਾਰਨਾ ਆ ਬਜਣਾ ਮਰ ਜਾਣਾ ਇਹ ਕੀ ਹੋ ਜਾਊਗਾ ਵੈਸੇ ਯਾਦ ਰੱਖਿਓ ਸਾਡੇ ਅੱਜ ਦੇ ਪਰਪੇਖ ਵਿੱਚ ਬਹੁਤੇ ਬੰਦੇ ਬੰਦਿਆਂ ਨੂੰ ਮਰਵਾਣਤੀ ਤੁੱਲੇ ਆ ਤੂੰ ਕਿਉਂ ਨਹੀਂ ਮਰਿਆ ਤੂੰ ਇਹਦਾ ਮਤਲਬ ਮਰ ਜਾ ਫਿਰ ਕੀ ਹੋ ਜੂਗਾ ਫਿਰ ਹੋ ਜੂਗਾ ਦਿਨ ਧੜ ਧਰਨਾ ਲਾਵਾਂਗੇ 5 ਦਿਨ ਫੋਟੋ ਖਿੱਚਾਂਗੇ 7 ਦਿਨ ਵਰਸੀਆਂ ਮਨਾਵਾਂਗੇ 7-8 ਸਾਲ ਮੈਂ ਆਪ ਨੂੰ ਫਿਰ ਬੇਨਤੀ ਕਰਾਂ ਕਰਮਖੰਡ ਦੇ ਵਸਨੀਕ ਫਿਜ਼ੀਕਲ ਤੌਰ ਤੇ ਵੀ ਜਾਂਦੇ ਆ ਚਲੋ ਤੁਹਾਡੇ ਸਾਹਮਣੇ ਇੱਕ ਉਦਾਹਰਨ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਨਾਮ ਤੋਂ ਕਿਹੜਾ ਜਾਣੂ ਨਹੀਂ ਉਸ ਮਹਾਪੁਰਖ ਸ਼ਹੀਦ ਨੂੰ ਸੱਚ ਇਹ ਵੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਜਿਤਨੀ ਸੰਗਤ ਆਉਂਦੀ ਹੈ ਉਸ ਮਹਾਪੁਰਖ ਦੇ ਅਸਥਾਨ ਨੂੰ ਮੱਥਾ ਟੇਕਦੀ ਹੈ। ਬਾਬਾ ਦੀਪ ਸਿੰਘ ਚਲੋ ਦੋਨੋਂ ਪੱਖ ਲੈ ਲਾਂਗੇ ਇਹ ਨਾ ਕਿਤੇ ਹੋਵੇ ਜੀ ਇਹ ਸਾਡੇ ਸ਼ਹੀਦਾਂ ਦੀ ਗੱਲ ਨੂੰ ਨਹੀਂ ਮੈਂ ਹਾਂ ਮੀ ਆ ਇਸ ਗੱਲ ਦੀ ਭਰਦਾ ਕਿ ਉਹ ਸ਼ਹੀਦ ਜਿਹੜਾ ਲੁੱਟ ਕਰਦਾ ਮਰ ਗਿਆ ਫਰੋਤੀਆਂ ਲੈਂਦਾ ਮਰ ਜਾਏ ਲੋਕਾਂ ਦੇ ਨਿਆਣੇ ਕਿਡਨੇਪ ਕਰਦਾ ਮਰ ਜਾਏ ਤੇ ਆਪਾਂ ਕੀ ਸ਼ਹੀਦ ਹੋ ਗਿਆ ਮੇਰਾ خیال ਬਹੁ ਗਿਣਤੀ ਧੱਕੇ ਲੈ ਜਾਗੇ ਸ਼ਹੀਦ ਕਹੋ ਪਰ ਸ਼ਹੀਦ ਹੋਵੇ ਮਰਨ ਮੁਨਸਾ ਸੋਰੀਆਂ ਹੱਕ ਹੈ ਜੇ ਕੋਈ ਮਰਨ ਪਰਵਾਣੋ ਉਥੇ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ਦਾਨ ਨਵਾਜਿਆ ਹੋਇਆ ਹੈ ਭਰ ਜਵਾਨੀ ਵਿੱਚ ਸਰਹੰਦ ਫਤਿਹ ਵੇਲੇ ਬਾਬਾ ਦੀਪ ਸਿੰਘ ਇਸ ਲੜਾਈ ਚ ਸ਼ਾਮਲ ਹੋਏ ਨੇ ਚੱਪੜ ਚਿੜੀ ਦੀ ਮੈਦਾਨ ਚ ਬਾਬਾ ਜੀ ਲੜਿਆ ਗਿਆਨੀ ਗਿਆਨ ਸਿੰਘ ਕਹਿੰਦਾ ਇਸ ਲੜਾਈ ਚ ਉਹਨਾਂ ਦਾ ਦੰਦ ਟੁੱਟਿਆ ਹੈ ਇਹ ਗਿਆਨੀ ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਪ੍ਰਿੰਚ ਪ੍ਰਚਾਰੀਨ ਪ੍ਰਚੀਨ ਪੰਥ ਪ੍ਰਕਾਸ਼ ਕਹਿੰਦਾ ਦੰਦ ਟੁੱਟਿਆ ਇੱਕ ਵਿਦਵਾਨ ਕਹਿੰਦਾ ਤਿੰਨ ਮਕੀਨੇ ਬਾਬਾ ਬੰਦਾ ਸਿੰਘ ਬਹਾਦਰ ਅਨੰਦਪੁਰ ਰਹੇ ਬਾਬਾ ਦੀਪ ਸਿੰਘ ਜੀ ਨੇ ਉਥੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਰਹੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਨੰਦਪੁਰ ਬਾਬਾ ਦੀਪ ਸਿੰਘ ਜੀ ਨੂੰ ਭਰੀ ਸੰਗਤ ਵਿੱਚ ਪੰਥ ਵੱਲੋਂ ਜਿੰਦਾ ਸ਼ਹੀਦ ਦਾ ਕਿਤਾਬ ਦਿੱਤਾ ਸੀ ਜਿੰਦਾ ਸ਼ਹੀਦ ਫਿਰ ਉਸ चार ਬਾਅਦ ਉਹ ਟਿਕ ਗਏ ਉਹਨਾਂ ਨੇ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ लिपि ਤਨ ਬਾਬਾ ਦੀਪ ਸਿੰਘ ਨੇ ਗੁਰਮੁਖੀ ਲਿਪੀ ਵਿੱਚ ਆਪਣੇ ਹੱਥਾਂ ਨਾਲ ਲਿਖੇ ਇਸ ਜੋ ਰਵਾਇਤ ਹੈ ਉਹਨਾਂ ਨੇ ਅਰਬੀ ਸਕ੍ਰਿਪਟ ਵਿੱਚ ਲਿਖਿਆ ਕੋਈ ਫਾਰਸੀ ਸ਼ਬਦ ਵਰਤੇ ਉਹਨਾਂ ਨੇ ਇੱਕ ਸਰੂਪ ਇਸ ਤਰ੍ਹਾਂ ਲਿਖਿਆ ਮੈਂ ਬੇਨਤੀ ਕਰਾਂ ਪੰਜ ਸਰੂਪ ਜਿਸ ਮਹਾਂਪੁਰਖ ਨੇ ਗੁਰੂ ਗ੍ਰੰਥ ਸਾਹਿਬ ਦੇ ਲਿਖੇ ਫਿਰ ਲਿਖਣ ਦਾ ਤਰੀਕਾ ਕੀ ਸੀ ਇੱਕ ਸ਼ਬਦ ਲਿਖਦੇ ਨੇ ਉਸ ਸ਼ਬਦ ਨੂੰ ਪਹਿਲਾਂ ਬੋਲਦੇ ਆ ਪੜ੍ਹਦੇ ਆ ਫਿਰ ਲਿਖਣ ਲੱਗਿਆ ਪੜ੍ਹਦੇ ਆ ਫਿਰ ਲਿਖਣ ਤੋਂ ਬਾਅਦ ਪੜ੍ਹਦੇ ਆ ਤੇ ਪਿਆਰਿਓ ਚੇਤੇ ਰਖਿਓ ਆਪ ਵਿਦਿਆਰਥੀਆਂ ਨੂੰ ਪੜ੍ਹਾਣ ਲਈ ਫਿਰ ਉਹਦੀ ਕਥਾ ਵੀ ਕਰਦੇ ਆ। ਇੰਨੀ ਬਾਣੀ ਜੇ ਸੰਦਰ ਰਚ ਜਾਏ ਉਹ ਗੁਰਬਾਣੀ ਬਣੀਆ ਹੈ ਉਹ ਜੋਤ ਮਹਾ ਬਲਸੂਰਖ ਹੈ। ਇੰਨੇ ਸ਼ਬਦ ਪੜੇ। ਭਾਰਤ ਜਵਾਨੀ ਦਾ ਸਮਾਂ ਸੀ ਤੇ ਕਲਮ ਚਲਾਈ ਗੁਰਮਖੋ ਜਿਸ ਵੇਲੇ ਬੁੱਢੇ ਪਾਇਆ ਖਬਰ ਮਿਲਦੀ ਏ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਤੋਖੀਨ ਹੋ ਰਹੀ ਏ। ਸੱਚ ਉਹ ਉਸ ਮਹਾਪੁਰਖ ਨੇ ਕਲਮ ਛੱਡ ਕੇ ਖੰਡੇ ਨੂੰ ਹੱਥ ਪਾ ਲਿਆ ਹੈ ਉਹ ਸੁਣਿਓ ਚਲਦੇ ਨੇ ਮੈਂ ਥੋੜਾ ਜਾਂ ਤਾਂ ਅਰਜ਼ ਕੀਤੀ ਇਸ ਸੂਰਮੇ ਕਰਮਖੰਡ ਦੇ ਵਸਨੀਕ ਨੇ ਕਰਮਖੰਡ ਵਾਲਾ ਫਿਰ ਸਿਰ ਵੀ ਤਲੀ ਤੇ ਰੱਖ ਕੇ ਤੁਰਦਾ ਤੇ ਰੱਬ ਕਲਾ ਵਰਤਾਂਦਾ ਹੈ ਉਹ ਚਲਦੇ ਆ ਦਮਦਮਾ ਸਾਹਿਬ ਤੋਂ ਬਾਬਾ ਜੀ ਸੈਂਕੜੇ ਬੰਦੇ ਨਹੀਂ ਥੋੜੇ ਜੇ ਬੰਦੇ ਗਿਣਤੀ ਦੇ ਸਿੱਖ ਉੱਥੇ ਮੈਂ ਹੈਰਾਨ ਹੋਇਆ ਉਹਨਾਂ ਦੀ ਅਰਦਾਸ ਕਿਸੀ ਹੈ ਅਰਦਾਸ ਵਿੱਚ ਇੱਕ ਬੜਾ ਵੱਡਾ ਪਰਨ ਹੈ ਅਸੀਂ ਅਕਸਰ ਟਾਡੀ ਕਵਿਸ਼ਰਾਂ ਤੋਂ ਸੁਣਨੇ ਆ ਬਾਪਾ ਦੀਪ ਸਿੰਘ ਚੱਲਦਿਆਂ ਅਰਦਾਸ ਕਰਦੇ ਨੇ ਦਮਦਮਾ ਸਾਹਿਬ ਕਿ ਓਨੀ ਦੇਰ ਤੱਕ ਮੈਂ ਮਰਨਾ ਨਹੀਂ ਜਿੰਨੀ ਦੇਰ ਤੱਕ ਮੈਂ ਸਿਰ ਗੁਰੂ ਰਾਮਦਾਸ ਦੇ ਬੂਹੇ 'ਚ ਨਹੀਂ ਲੈ ਜਾਂਦਾ ਯਾਦ ਰੱਖਿਓ ਇਹ ਪਰਨ ਅਨੋਖਾ ਨਹੀਂ ਕਿਸ ਅਵਸਥਾ ਚੋ ਮਹਾਪੁਰਖ ਵਰਤਦਾ ਹੈ ਤੇ ਅਗਲੀ ਗੱਲ ਕਰਮਖੰਡ ਕੀ ਬਾਣੀ ਜ਼ੋਰ ਉਹਦੇ ਬੋਲ ਵਿੱਚ ਇੰਨੀ ਤਾਕਤ ਹੈ ਕਿ ਰੱਬ ਨੇ ਉਹਦਾ ਬੋਲ ਵੀ ਝੂਠਾ ਨਹੀਂ ਪੈਣ ਦੇਣਾ ਉਹ ਸਿਰ ਤਲੀ ਤੇ ਰੱਖ ਕੇ ਪ੍ਰਕਰਮਾ ਚ ਪੜੇਗਾ ਪਰ ਤਾਕਤ ਉਹਦੇ ਬੋਲ ਨੇ ਹੰਕਾਰ ਦੇ ਨਹੀਂ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਬਾਬਾ ਦੀਪ ਸਿੰਘ ਕਹਿੰਦੇ ਸੀਸ ਸੁਦਾ ਸਰਖੇਤ ਕਰ ਦੇਵੇਂ ਕੇ ਹਮ ਜਾਏ ਕਰ ਅਰਦਾਸਾ ਚੱਲ ਪੈ ਸਿੰਘ ਜੀ ਫਤਿਹ ਜਾਏ ਉੱਥੋਂ ਤੁਰਦਿਆ ਅਰਦਾਸ ਕਰਕੇ ਮੈਂ ਬੇਨਤੀ ਕਰਾਂ ਸੰਖੇਪ ਜਾਂ ਤਰਨਤਾਰਨ ਸਹਿਬ ਹੁੰਦੇ ਆ ਤਰਨਤਾਰਨ ਸਹਿਬ ਅਰਦਾਸ ਹੁੰਦੀ ਹੈ ਜਿੱਥੇ ਗੁਰਦੁਆਰਾ ਲੋਹ ਲਕੀਰ ਸਾਹਿਬ ਹੈ ਇੱਥੇ ਫਿਰ ਖਲੋ ਕੇ ਲਕੀਰ ਖਿੱਚਦਾ ਉਹ ਬਜ਼ੁਰਗ ਕਿ ਮੇਰੇ ਪਿੱਛੇ ਉਹ ਆਇਓ ਜਿਨ੍ਹਾਂ ਸਿਰ ਦੇਣਾ ਹੈ ਸਾਰੇ ਲਕੀਰ ਟੁੱਪ ਗਏ ਕੋਈ ਵੀ ਪਿੱਛੇ ਨਹੀਂ ਮੁੜਿਆ ਜਿੱਥੇ ਗੁਰਦੁਆਰਾ ਤਾਲਾ ਸਾਹਿਬ ਹੈ ਜਦੋਂ ਆਪਾਂ ਤਰਨਤਾਰਨ ਸਾਹਿਬ ਤੋਂ ਅੰਮ੍ਰਿਤਸਰ ਜਾਂਦੇ ਆ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਐ ਇੱਥੇ ਫਿਰ ਗੁੱਥਮ ਗੁਤਾ ਹੁੰਦੇ ਆ ਮੈਂ ਇੱਕ ਬੇਨਤੀ ਕਰਾਂਗਾ ਆਸਤਾ ਸਹਿਤ ਕਿ ਜਿਸ ਪਠਾਨ ਨੇ ਈਯੂਬ ਖਾਉਂਦਾ ਜਿਸ ਪਠਾਨ ਨੇ ਇਸ ਮਹਾਨ ਬਜ਼ੁਰਗ ਜਰਨੈਲ ਨੂੰ ਵੰਗਾਰਿਆ ਬਾਹਾਂ ਉਹਦੀਆਂ ਵਿੱਚ ਵੀ ਤਾਕਤ ਬੜੀ ਸੀ ਇਹ ਵੰਗਾਰ ਕੇ ਕਹਿਣਾ ਮੇਰੇ ਸਾਹਮਣੇ ਆ ਬਾਬਾ ਜੀ ਦੇ ਹੱਥ 'ਚ ਖੰਡਾ ਹੈ ਸ਼੍ਰੀਮਾਨ ਭਾਈ ਸਾਹਿਬ ਪਾਈਰਨ ਤੀਰ ਸਿੰਘ ਦੀ ਕਿਤਾਬ ਗੁਰਮਤ ਨਾਮ ਅਭਿਆਸ ਕਮਾਈ ਉਹਦੀ ਭੂਮਿਕਾ ਚ ਲਿਖਦਿਆ ਉਹ ਕਿ ਜਿਹਦੇ ਸਿਰ ਤੇ ਖੰਡਾ ਪੈਂਦਾ ਸੀ ਸੱਚੇ ਵੇ ਉਹਦੇ ਖੰਡੇ ਦੀ ਤਸਵੀਰ ਉਹਦੇ ਉੱਤੇ ਵੀ ਅਸਰ ਕਰ ਜਾਂਦੀ ਸੀ ਉਹ ਤੁਰਦੇ सामने ਜਿਹੜਾ ਸਾਹਮਣੇ ਵੰਗਾਰਦਾ ਪਿਆ ਮੈਂ ਕਹਿੰਨਾ ਉਹ ਤਾਕਤ ਹੈ ਆਮਣੇ ਸਾਹਮਣੇ ਦੋਨਾ ਪਾਸਿਆਂ ਤੋਂ ਦਵੱਲੀ ਵਾਰ ਦਵੱਲੀ ਸਮਝ ਕੇ ਦੋਨਾ ਪਾਸਿਆਂ ਤੋਂ ਇੱਕੋ ਦਮ ਇਕੱਠਾ ਵਾਰ ਹੁੰਦਾ ਉਹ ਬਾਬਾ ਜੀ ਦਾ ਸੀਸ ਲਾ ਦਿੰਦਾ ਬਾਬਾ ਜੀ ਉਹਦਾ ਸਿਰ ਲਾ ਦਿੰਦੇ ਆ ਗਿਆਨੀ ਗਿਆਨ ਸਿੰਘ ਲਿਖਦਾ ਤਲੀ ਚਲੀ ਤੇਗ ਅਤ ਬੇਗ ਸਿਓ ਦੋਨਾ ਪਾਸਿਓ ਚੱਲੇ ਸ਼ਸਤਰ ਤੇਗ ਚੱਲੀ ਚਲੀ ਤੇਗ ਅਤ ਬੇਗ ਸਿਓ ਦੂਹ ਕੇਰਬਲ ਧਾਰ ਉਤਰ ਗਏ ਸੀਸ ਦੂਹਾਂ ਕੇ ਪਰਸ ਪਰੇ ਇਕਸਾਰ ਉਹ ਲਗਦਾ ਉਤਰ ਗਏ ਸੀ ਇਸ ਦੁਆ ਕੇ ਪਰਸ ਪਰੇ ਇਕਸਾਰ ਪਰ ਮੈਂ ਜਿਹੜੀ ਆਪ ਨੂੰ ਬੇਨਤੀ ਕਰ ਲਗਾ ਕਿਸੇ ਦੀ ਇਹ ਨਹੀਂ ਕਿ ਕੋਈ ਮੰਨੇ ਨਾ ਮੰਨੇ ਮੈਨੂੰ ਉਹਦੇ ਨਾਲ ਕੋਈ ਪਰਵਾਹ ਨਹੀਂ ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਬਖਸ਼ਿਸ਼ ਵਾਲੀ ਕਹਾਣੀ ਬੜੀ ਵਖਰੀ ਹੈ ਉਹਨੇ ਵੰਗਾਰਿਆ ਉਹਨੇ ਤਲਵਾਰ ਚਲਾਈ ਉਹਨੇ ਵੀ ਤੇਗ ਚਲਾਈ ਬਾਬਾ ਜੀ ਨੇ ਵੀ ਖੰਡਾ ਚਲਾਇਆ ਆਪਾਂ ਕਹਾਂਗੇ ਸੂਰਮੇ ਤਾਂ ਬਰਾਬਰ ਦੇ ਨੇ ਨਾ ਪਾਵੇਂ ਉਮਰ ਕਰਕੇ ਬਾਬਾ ਦੀਪ ਸਿੰਘ ਵੱਡੇ ਨੇ ਪਰ ਤਾਂਕ ਤਾਂ ਵੇਖੋ ਵੰਗਾਰ ਰਿਹਾ ਹੈ ਪਰ ਫਰਕ ਇਹ ਨਹੀਂ ਇਹ ਕਰਮਖੰਡ ਦਾ ਵਸਨੀਕ ਹੈ ਉਹਦਾ ਸਿਰ ਲੈਂਦਾ ਤੇ ਤੜਪ ਕੇ ਪ੍ਰਾਨ ਤਿਆਗਦਾ ਇਹਦਾ ਸਿਰ ਲੈਂਦਾ ਤੇ ਤਲੀ ਤੇ ਰੱਖ ਕੇ ਗੁਰੂ ਰਾਮਦਾਸ ਦੇ ਘਰ ਨੂੰ ਚਲਾ ਜਾਂਦਾ ਹੈ ਮੈਂ ਬੇਨਤੀ ਕਰਾਂ ਉਹ ਸ਼ਰਮਗਤੀ ਇਹਦੇ ਕੋਲ ਨਹੀਂ ਇਸ ਲੜਾਈ ਕਰਨ ਵਾਲੇ ਕੋਲ ਹੋਰ ਸ਼ਰਮਗਤੀ ਨਹੀਂ ਜਿਹੜੀ ਕਰਮਖੰਡ ਦੀ ਬਾਣੀ ਯੋਰ ਵਾਲੇ ਬਾਬਾ ਦੀਪ ਸਿੰਘ ਕੋਲ ਹੈ ਨਾ ਆਪ ਨੂੰ ਫਿਰ ਬੇਨਤੀ ਕਰਾਂ ਮੈਂ ਇਹ ਨਹੀਂ ਕਹਿ ਰਿਹਾ ਵੀ ਬਾਹਰ ਮੁਕੀ ਸੂਰਮਾਨੀ ਗੁਰੂ ਘਰ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਦੂਸਰੀ ਗੱਲ ਤਨ ਜਿਉ ਤੇ ਕੋ जग ਮੈਂ ਮੁਖਤੇ ਖਰ ਚਿਤ ਮੈਂ ਜੁਦ ਵਿਚਾਰਾ ਦੇ ਅਨਿਤ ਨਿਤ ਰਹੇ ਜਸਨਾਬ ਚੜੇ ਭਵ ਸਾਗਰ ਤਰੈ ਤਿਰਜ ਤਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉ ਜਿਆਰੈ गाने की बडनी मनोखात ले कातर तक तवार बहार है एक कर्मखंड ਦੇ ਵਸਨੀਕ ਨੇ ਤੇ ਇਹ ਗੱਲ तकरीबन 10 ਕਈ ਸਾਲਾਂ ਤੋਂ ਬਾਬਾ ਜੀ ਦੇ ਜਨਮ ਦਿਹਾੜੇ ਵਾਲੇ ਕਥਾ ਕਰਦਾ ਛੀਦਾ ਤੇ ਮੈਂ ਇਹ ਬੇਨਤੀ ਉੱਥੇ ਕੀਤੀ ਅਸੀਂ ਮੱਥਾ ਟੇਕਨੇ ਆ ਪਤਾ ਨਹੀਂ ਲੱਗਦਾ ਕਿੱਥੇ ਮੱਥਾ ਟੇਕਿਆ ਚਾ ਮਾਰਬਲ ਹੈ ਅੱਜ ਕੱਲ੍ਹ ਇੱਕ ਉਰਦੂ ਦਾ ਵਿਦਵਾਨ ਕਹਿੰਦਾ ਹੈ ਇਸਲਾਮ ਨਾਲ ਸੰਬੰਧ ਉਹ ਕਹਿੰਦਾ ਤੂੰ ਰੱਬ ਨੂੰ ਸਜਦੇ ਕਰਨਾ ਤੇ ਸਜਦਿਆਂ ਦੇ ਨਿਸ਼ਾਨ ਤੇਰੇ ਮੱਥੇ ਦੀ ਸਕਿਨ ਤੇ ਚਮੜੀ ਤੇ ਪੈਂਦੇ ਨੇ ਕਾਹਦਾ ਮੱਥਾ ਟੇਕਿਆ ਜੇ ਚਮੜੀ ਤੇ ਨਿਸ਼ਾਨ ਪਿਆ ਇਹੋ ਜਿਹਾ ਮੱਥਾ ਟੇਕ ਜ਼ਮੀਨ ਤੇ ਨਿਸ਼ਾਨ ਪੈ ਜਾਏ ਤੇ ਰਹਿੰਦੀ ਦੁਨੀਆ ਤੱਕ ਨਿਸ਼ਾਨ ਕੋਈ ਮਿਟਾ ਨਾ ਸਕੇ ਬੇਨਤੀ ਕਰਾਂ ਜਦੋਂ ਪਰਕਰਮਾਂ 'ਚੋਂ ਲੰਘਨੇ ਆ ਆਪਣੇ ਬੱਚਿਆਂ ਨੂੰ ਕੀ ਦੱਸਦੇ ਹੋ ਆਪ ਜੀ ਇਹੀ ਦੱਸਦੇ ਹੋ ਨਾ ਕਿ ਇੱਥੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਸਿੱਖ ਉਹਨੇ ਸੀਸ ਰੱਖ ਕੇ ਮੱਥਾ ਟੇਕਿਆ ਸੀ ਇਹੋ ਜਿਹਾ ਮੱਥਾ ਟੇਕਿਆ ਜ਼ਮੀਨ ਤੇ ਪੱਕਾ ਨਿਸ਼ਾਨ ਪੈ ਗਿਆ ਉੱਥੇ ਕੇਸਰੀ ਚੋਲਦਾ ਬਿਆ ਹੈ ਮੈਂ ᱮਮੋਸ਼ਨਲ ਕਰਲੀ ਨਹੀਂ ਸਿਰਫ ਇਸ ਕਰਕੇ ਬੇਨਤੀ ਕਰ ਰਿਹਾ ਗੁਰੂ ਜਿਹੜੀ ਖੇਡ ਉਹਨੇ ਬਾਹਰ ਦੇ ਵਰਤਾਰੇ ਚ ਵਰਤਣੀ ਹੈ ਇਹ ਕੇਵਲ ਸਿੱਧਾਂ ਦੀਆਂ ਸਮਾਧੀਆਂ ਨਹੀਂ ਜਿਹੜੇ ਵਰਤਾਰੇ ਗੁਰਦੇਵ ਦੇ 10ਵੇਂ ਜਾਮੇ 6ਵੇਂ ਜਾਮੇ ਵਰਤਾਰੇ ਨੇ ਅੱਗੇ ਖਾਲਸਾ ਜਿਨੇ ਵਰਤਾਰੇ ਨੇ ਗੁਰੂ ਨਾਨਕ ਸਾਹਿਬ ਕਹਿੰਦਾ ਮੇਰੇ ਘਰ ਦਾ ਸੂਰਮਾ ਕਰਮਖੰਡ ਦਾ ਵਸਨੀਕ ਹੋਵੇਗਾ ਉਹ ਇੰਨੀ ਸਾਧਨਾ ਕਰਕੇ ਨਿਕਲਿਆ ਹੋਵੇਗਾ ਬੰਦਗੀ ਕਰਕੇ ਗੁਰੂ ਜੀ ਨੇ ਇੱਥੇ ਜੋਧ ਮਹਾ ਬਲਸੂਰ ਕਿਹਾ ਕਰਮਖੰਡ ਕੀ ਬਾਣੀ ਜ਼ੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾ ਚਿੱਤੈ ਜੋਧ ਮਹਾ ਬਲਸੂਰ ਉੱਥੇ ਸੂਰਮੇ ਨੇ ਮਹਾਰਾਜ ਨੇ ਤਿਨ ਮੈਂ ਰਾਮ ਰਹਾ ਭਰਪੂਰ ਉਹਨਾਂ ਦਾ ਇੱਕ ਰੋਮ ਵੀ ਨਹੀਂ ਜਿੱਥੇ ਰੱਬ ਭਰਪੂਰ ਨਹੀਂ ਰਾਮ ਕਾ ਅਰਥ ਅਸੀਂ ਸਰਵ ਵਿਆਪਕ ਕੀਤਾ ਪਰਮਾਤਮਾ ਤਿਨ ਮੈਂ ਰਾਮ ਰਹਾ ਭਰਪੂਰ ਤਿਥੈ ਕਰਮਖੰਡ ਵਿੱਚ ਸੀਤੋ ਸੀਤਾ ਮਹਿਮਾ ਮਾਹੇ ਜਿੱਥੇ ਦਾ ਅਰਥ ਹੈ ਹੋਗਾ ਜੀ ਉਥੇ ਵੇਖੋ ਮੈਂ ਫਿਰ ਆਪ ਨੂੰ ਆਰੰਭ ਚ इस ਸੀ ਵੀ ਇਸ ਤੁਕ ਦੇ ਅਨੇਕ ਅਰਥ ਕੀਤੇ ਗਿਆ ਮੈਂ ਪਾਠ ਸੀਤੋ ਸੀਤਾ ਕੀਤਾ ਹੈ भी ਇੱਕ सीतो सीता ਵੀ है। कुछ ਸੀਤੋ अर्थ सीता जी दे अर्थ सीता जी ਦੇ कर ਸੀਤਾ ਜੀ ਨਾਲ ਕਰ ਰਹੇ ਆ ਕਈ ਸੀਤਾ ਯਾਦ ਰੱਖੋ ਸੀਤਲ ਵੀ ਉਸ ਅਵਸਥਾ ਚ ਪਹੁੰਚੇ ਕੋਈ ਸੀਤਲ ਨੇ ਕੁਝ ਅਰਥ ਕਰ ਰਿਹਾ ਵੀ ਇਸ ਅਵਸਥਾ ਚ ਸੀਤਾ ਵਰਗੀਆਂ ਨਾਰੀਆਂ ਵੀ ਸ਼ੋਭਦੀਆਂ ਪਈਆਂ ਨੇ ਮੈਨੂੰ ਇਹ ਨਹੀਂ ਮੈਂ ਦਾਵਾ ਕਰਾਂ ਵੀ ਜੋ ਅਰਥ ਮੈਂ ਕਰ ਚੱਲਿਆ ਇਹ ਜੇ ਇੰਜ ਪ੍ਰਤੀਤ ਹੁੰਦਾ ਤਿਨ ਮੈ ਰਾਮ ਰਹਾ ਭਰਪੂਰ ਉਸ ਅਵਸਥਾ ਵਿੱਚ ਉਹਨਾਂ ਗੁਰਮਖਾਂ ਅੰਦਰ ਪਰਮਾਤਮਾ ਪਰੀਪੂਰਣ ਹੈ ਕਿਵੇਂ ਪਰੀਪੂਰਣ ਤਿਥੈ ਸੀਤੋ ਸੀਤਾ ਇੱਥੇ ਫਿਰ ਬੇਨਤੀ ਹੈ ਸੀਤਾ ਪਾਠ ਕਰਾਂਗੇ ਤੇ ਸਾਡਾ ਧਿਆਨ ਸੀਤਾ ਸ਼੍ਰੀ ਰਾਮਚੰਦਰ ਜੀ ਦੇ ਘਰੋਂ ਵੱਲ ਜਾਏਗਾ ਜਦੋਂ ਪਾਠ ਕਰਾਂਗੇ ਸੀਤਾ ਸੀਤਾ ਦਾ ਅਰਥ ਕੀ ਹੁੰਦਾ ਹੈ ਸਿਉ ਦੇਣਾ ਕਪੜਾ ਸੀਤਾ ਗਿਆ ਗੁਰੂ ਜੀ ਦਾ ਇੱਕ ਸ਼ਬਦ ਹੁੰਦਾ ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਟ ਹੈ ਇੰਜ ਪ੍ਰਤੀਤ ਹੁੰਦਾ ਮਹਿਮਾ ਮਾਹੇ ਉਹ ਪਰਮਾਤਮਾ ਦੀ ਸਿਮਰਨ ਵਿੱਚ ਮਹਿਮਾ ਵਿੱਚ ਇੰਨੇ ਕੋ ਸੀਤੇ ਗਿਆ ਇੰਨੇ ਕੋ ਪਰੂਤੇ ਪਰੋਤੇ ਗਿਆ ਮੈਂ ਤਾਂ ਅਰਜ਼ ਕੀਤੀ ਇਹ ਪ੍ਰਮਾਣ ਤਾਂ ਦਿੱਤਾ ਆਪਾਂ ਸੀਤਾ ਤਾਂ ਪਾੜ ਜਾਂਦਾ ਪਰ ਗੁਰੂ ਨਾਨਕ ਸਾਹਿਬ ਦੀ ਇਹ ਸ਼ਬਦ ਹੈ ਕਹਿੰਦੇ ਨੇ ਨਹੀਂ ਕੱਪੜਾ ਸੀਤਾ ਹੋਇਆ ਪਾੜ ਜਾਂਦਾ ਮਹਿਮਾ ਵਿੱਚ ਸੀਤੇ ਹੋਏ ਕਦੀ ਨਹੀਂ ਪਾੜਦੇ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਟੇ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਉਸ ਦੀ ਮਹਿਮਾ ਵਿੱਚ ਉਹ ਸੀਤੇ ਗਿਆ ਪਰੋਤੇ ਗਿਆ ਹੁਣ ਫਿਰ ਬੇਨਤੀ ਇਹ ਇਹਨੂੰ ਥੋੜਾ ਜਿਹਾ ਹੋਰ ਸਮਝਣ ਲਈ ਵੀ ਵਾਕਿਆ ਨਾ ਹੋਵੇ ਸੀਤਾ ਹੋਵੇ ਉਹ ਕੰਮ ਕਰੇ ਉਹ ਘੁੰਮੇ ਉਹ ਫਿਰੇ ਉਹ ਗੱਲਬਾਤ ਕਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਿਲਕੁਲ ਨਹੀਂ ਉਹ ਸੱਚੀ ਮੁੱਚੀ ਸੀਤਾ ਰਹਿੰਦਾ ਉਹ ਨਹੀਂ ਵਕ ਹੁੰਦਾ ਪਰੋਤਾ ਰਹਿੰਦਾ ਜਿਵੇਂ ਇੱਕ ਪਾਠ ਹੈ ਮਨ ਰਾਮ ਨਾਮਾ ਵੇਦੀਲੇ ਇਹ ਵਿੰਨਿਆ ਗਿਆ ਪੂਰਾ ਜੈਸੇ ਕਨਕ ਕਲਾਚਿਤ ਮਾਂਢਿ ਹਲੇ ਪੂਰਾ ਸੀਤਾ ਹੋਇ ਉਸਨ ਪ੍ਰੋਤਾ ਗਿਆ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਪਰਮਾਤਮਾ ਦੀ ਮਹਿਮਾ ਵਿੱਚ ਪਰਮੇਸ਼ਵਰ ਦੀ ਮਹਿਮਾ ਵਿੱਚ ਉਹ ਸੀਤੇ ਗਏ ਉਹ ਪ੍ਰੋਤੇ ਗਏ ਉਹ ਜੁੜ ਗਏ ਮਹਾਰਾਜ ਕਹਿੰਦੇ ਨੇ ਤਾਂ ਕਿ ਤਾਂ ਕਿ ਦਰਥੇ ਉਹਨਾਂ ਦੇ ਕਿਹੜੇ ਜਿਹੜੇ ਕਰਮਖੰਡ ਕੀ ਬਾਣੀ ਜ਼ੋਰ ਤਾਂ ਕਿ ਉਹਨਾਂ ਦੇ ਕੀਜੀ ਰੂਪ ਨਾ ਕਥਨੇ ਜਾਹੇ ਉਹਨਾਂ ਦੇ ਰੂਪ ਨੂੰ ਮੈਂ ਫਿਰ ਅਰਜ਼ ਕੀਤੀ ਇਸ ਰੂਪ ਦਾ ਅਰਥ ਕੇਵਲ ਬਾਹਰ ਮੁਖੀ ਚਮਕ-ਦਮਕ ਨਹੀਂ ਹਾਂ ਇਸ਼ਾਰੇ ਜ਼ਰੂਰ ਕੀਤੇ ਨਾ ਮੈਲਾ ਨਾ ਭਗਵਾ ਜਿਹੜੇ ਸੀ ਪਾਠ ਕਰਨੇ ਨਾ ਮੈਲਾ ਨਾ ਧੁੰਦਲਾ ਸਤਗੁਰੂ ਨੇ ਕਿਹਾ ਉਹ ਉਹਦੇ ਤੇ ਕੋਈ ਵੀ ਕਿਸੇ ਕਿਸਮ ਦਾ ਦਾਗ ਨਹੀਂ ਉਸ ਨਾਨਕ ਲਾਲੋ ਲਾਲ ਸੱਚੇ ਰਤਾ ਸੱਚ ਲਾਲ ਚੋਲਣਾ ਤਹਿ ਤਨ ਸੋਇਆ ਜਿਨ ਕੇ ਚੋਲੇ ਰਤੜੇ ਪਿਆਰੇ ਫਿਰ ਬੇਨਤੀ ਉਹ ਉਸ ਇਨਾ ਕੋ ਰੂਪ ਡਲਕਾ ਮਾਰ ਰਿਹਾ ਉਹਨਾਂ ਦੇ ਅੰਦਰ ਉਸ ਨਾਮ ਦੀ ਬਖਸ਼ਿਸ਼ ਗੁਰੂ ਜੀ ਕਹਿੰਦੇ ਤਾਂ ਕਿ ਰੂਪ ਨਾ ਕਥਨੇ ਜਾਏ ਉਹਨਾਂ ਦੇ ਰੂਪ ਨੂੰ ਉਹਨਾਂ ਦੇ ਸੁਹੱਪਣ ਨੂੰ ਕੋਈ ਬੰਦਾ ਕਥਨ ਨਹੀਂ ਕਰ ਸਕਦਾ ਮੈਂ ਫਿਰ ਬੇਨਤੀ ਕਰਾਂ ਇਹ ਨੂੰ ਸਿਰਫ ਚਮੜੀ ਨਾਲ ਜੋੜ ਕੇ ਨਾ ਦੇਖਿਓ ਇਹਦੇ ਚਿਹਰੇ ਤੇ ਲਾਲੀ ਭਖਦੀ ਏ ਹਰ ਲਾਲੀ ਵਾਲਾ ਚਿਹਰਾ ਬੰਦਗੀ ਵਾਲਾ ਨਹੀਂ ਹੁੰਦਾ ਕਈ ਗੋਰੇ ਕੋ ਜੇ ਮਿਲਦੇ ਨੇ ਇੰਜ ਲੱਗਦਾ ਵੀ ਜਿਵੇਂ ਅੱਗ ਭਲਦੀ ਵਿੱਚ ਚਿਹਰੇ ਤੇ ਪਰ ਮੈਂ ਬੇਨਤੀ ਕਰਾਂਗਾ ਇਹ ਉਹ ਨੇ ਇਹ ਮਨਸੁੰਦਰ ਆਪਣਾ ਹਰਨਾਮ ਮਜੀਠਾ ਰੰਗਰੀ ਉਹਨਾਂ ਦੇ ਰੂਪ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਤਾਂ ਕਿ ਰੂਪ ਨਾ ਕਥਨੇ ਜਾਹੇ ਅਗਲਾ ਬਚਨ ਨਾ ਉਹੇ ਮਰਹਿ ਉਹ ਮਰਦੇ ਨਹੀਂ ਆਤਮਿਕ ਮੌਤ ਨਹੀਂ ਮਰਦੇ ਪਰ ਸ਼ੀਤਤਾਪਕ ਇਹਨੇ ਚਲਾ ਜਾਂਦਾ ਸ਼ਾਦਤ ਦਾ ਅਰਥ ਹੀ ਇਹ ਵੇ ਸਾਡੇ ਕਨਸੈਪਟ ਚ ਜਿਹਦਾ ਜਿਹੜਾ ਸਰੀਰਕ ਤੌਰ ਤੇ ਚਲਾ ਗਿਆ ਪਰ ਗੁਰੂ ਜੀ ਕਹਿੰਦੇ ਆ ना ਖੰਡ ਵਿੱਚ ਉਹ ਵਸਦੇ ਆ ਨਾ ਉਹ ਮਰ ਹੈ ਨਾ ਮਰਦੇ ਨੇ ਨਾ ਠਾਗੇ ਜਾਹੇ ਉਹਨਾਂ ਨੂੰ ਕੋਈ ਠੱਗ ਵੀ ਨਹੀਂ ਸਕਦਾ ਵਾਸ਼ਨਾ ਕੋਈ ਠੱਗ ਨਹੀਂ ਸਕਦਾ ਕਿਨਾਂ ਦੇ ਜੀ ਜਿਨ ਕੈ ਰਾਮ ਵਸੈ ਮਨ ਮਾਹੇ ਉਹ ਸੀਤੇ ਨੇ ਨਾ ਜਿਨ੍ਹਾਂ ਦੇ ਤੁਰ ਅੰਦਰ ਰਾਮ ਵਸਦਾ ਪ੍ਰਭੂ ਵਸਦਾ ਹੈ ਉਹਨਾਂ ਨੂੰ ਵਾਸ਼ਨਾ ਵੀ ਨਹੀਂ ਠੱਗ ਸਕਦੀ ਉਹਨਾਂ ਨੂੰ ਕੋਈ ਸੰਸਾਰ ਦਾ ਵੱਲ ਸ਼ੇਲ ਨਹੀਂ ਠੱਗ ਸਕਦਾ ਤਾਂ ਕੋ ਧੋਕਾ ਕਹਾ ਵਿਆਪੈ ਜਾ ਕੋ ਓੜ ਤੁਹਾਰੀ ਮਹਾਰਜ ਕਹਿੰਦੇ ਨੇ ਭਾਈ ਜਿਨ ਕੈ ਰਾਮ ਵਸੈ ਮਨ ਮਾਹੇ ਸਤਗੁਰੂ इस करम ਵਿੱਚ ਕੀ ਐਸ ਧਰਮਖੰਡ ਦੀ ਲੋਕ ਰਹਿੰਦੇ ਆ ਕਿਉਂਕਿ ਮੈਂ ਕਹਿਆ ਸੀ ਇਹ ਧਰਤੀ ਧਰਮਸ਼ਾਲਾ ਕੀ ਇਸ ਖੰਡ ਵਿੱਚ ਉਹ ਨੇ ਮਹਾਰਜ ਕਹਿੰਦੇ ਨਹੀਂ ਤਿੱਥੈ ਭਗਤ ਵਸੈ ਕੇ ਲੋ ਕਈ ਲੋਕਾਂ ਦੇ ਲੋਦਰ ਤੇ ਲੋਕ ਸਿਰਫ ਤੇ ਸਿਰਫ ਇਸ ਧਰਤੀ ਦੇ ਨਹੀਂ ਕਰਮਖੰਡ ਵਿੱਚ ਪਤਾ ਨਹੀਂ ਉਹਨਾਂ ਸਾਰਿਆਂ ਦੇ ਜਿਹੜੇ ਭਗਤ ਜਾਨੇ ਕਰਮਖੰਡ ਦੇ ਵਿੱਚ ਵਸਦੇ ਪਏ ਆ ਰੂਹਾਨੀਅਤ ਇੱਕ ਹੈ ਮਰਜ ਕੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਉਹ ਆਤਮਿਕ ਅਵਸਥਾ ਵਿੱਚ ਆਨੰਦਤ ਨੇ ਸੱਚਾ ਮਨ ਸੋਏ ਉਹਨਾਂ ਦੇ ਮਨ ਵੀ ਸੱਚਾ ਵਸਿਆ ਹੈ ਫਿਰ ਮੈਂ ਬੇਨਤੀ ਕਰਾਂ ਇਸ ਖੰਡ ਵਿੱਚ ਵਾਰ-ਵਾਰ ਅੰਦਰ ਦਾ ਜ਼ੋਰ ਲਾਇਆ ਜਿਵੇਂ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਫਿਰ ਸ਼ਬਦ ਆਇਆ ਤਿਨ ਮੈਂ ਰਾਮ ਰਹਾ ਭਰਪੂਰ ਆਇਆ ਫਿਰ ਗੁਰੂ ਜੀ ਇੱਥੇ ਕਹਿ ਰਿਹਾ ਉਹਨਾਂ ਦੇ ਅੰਦਰ ਮਨ ਵੀ ਸੱਚਾ ਪ੍ਰਮਾਤਮਾ ਉਹ ਆਤਮਿਕ ਆਨੰਦ ਵਿੱਚ ਨੇ ਕਰੇ ਸੱਚਾ ਮਨ ਅੱਗੇ ਫਿਰ ਗੁਰੂ ਜੀ ਸ਼ੁਰੂ ਕਰਦੇ ਆ ਪੰਜਵਾਂ ਖੰਡ ਇੱਥੋਂ ਤੱਕ ਕਰਮ ਖੰਡ ਸੀ ਜੀ ਗੁਰੂ ਜੀ ਕਹਿੰਦੇ ਸੱਚ ਖੰਡ ਵਸੈ ਨਰੰਕਾਰ ਮੈਂ ਸਿਰਫ ਅਖਰੀ ਅਰਥ ਕਰ ਜਾਾਂਗੇ ਇਹ ਪਹਿਲੇ ਮੈਂ ਯਤਨ ਕੀਤਾ ਅਰਥ ਕਰਨ ਦੇ ਪਰ ਗੁਰੂ ਜੀ ਜਾਣ ਸੱਚਖੰਡ ਵਿੱਚ ਨਿਰੰਕਾਰ ਵਸਦਾ ਹੈ ਇਹ ਨਹੀਂ ਕੋਈ ਹਰਕਤ ਨਹੀਂ ਕੋਈ ਕਰ ਰਿਹਾ ਕਰ ਕਰ ਵੇਖੈ ਨਦਰ ਨਖਾਲ ਉਹ ਆਪ ਬਣਾ ਰਿਹਾ ਸਭ ਕੁਝ ਉਹ ਕਰਤਾ ਹੈ ਕਰ ਰਿਹਾ ਵੇਖੇ ਦਰ ਤੇ ਸੰਭਾਲ ਰਿਹਾ ਵੇਖੋ ਇੱਥੇ ਇੱਕ ਸ਼ਬਦ ਵਰਤਿਆ ਨਦਰ ਨਿਹਾਲ ਹੈ ਇਸ ਬਸਥਾ ਚ ਹਾਲਾਂਕਿ ਕਈਆਂ ਤੇ ਨਦਰ ਉਪੱਠੀ ਵੀ ਹੁੰਦੀ ਪਰ ਇਸ ਇਸ ਖੰਡ ਵਿੱਚ ਕੋਈ ਉਪੱਠੀ ਨਦਰ ਨਹੀਂ ਇਹਨੂੰ ਗੁਰੂ ਜੀ ਜਿਵੇਂ ਕਹਿੰਦੇ ਆ ਬੇਗੰਪੁਰਾ ਸ਼ਹਿਰ ਕੋ ਨਾਉ ਦੂਖ ਅੰਦੋਰ ਨਹੀਂ ਟੈਠਾਉ ਰਬਦਾਸ ਜੀ ਨਾ ਤਸਵੀਜ਼ ਖਰਾਜ਼ ਨਾ ਮਾਲ ਖੋਪ ਨਾ ਖਤਾ ਨ ਤਰਸ ਜਵਾਲ ਅਬ ਮੈਂ ਖੂਬ ਵਤਨ ਗਏ ਭਾਈ ਤਿੱਥੇ ਭਗਤ ਵੈਸੈ ਕਿ ਕਦ ਨੇ ਮੈਂ ਉਸ ਸ਼ਹਿਰ ਚ ਰਹਿਣਾ ਜਿੱਥੇ ਗਮ ਨਾਂ ਦੀ ਚੀਜ਼ ਕੋਈ ਨਹੀਂ ਜਿੱਥੇ ਚਿੰਤਾ ਕੋਈ ਨਹੀਂ ਦਿਸੇ ਟੈਕਸ ਕੋਈ ਨਹੀਂ ਲਾਂਦਾ ਜਿੱਥੇ ਸੱਚੀ ਮੁੱਚੀ ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲਦੀ ਕਿਉਂ ਕਿਉਂਕਿ ਸ਼ਹਿਰੀ ਰਹਿੰਦੇ ਨੇ ਜਿਹੜੇ ਇਸ ਅਵਸਥਾ ਵਿੱਚ ਖੇਡਦੇ ਨੇ ਬੇਗਮ ਸ਼ਹਿਰ ਕੋ ਨਾਉ ਦੁੱਖ ਅੰਧੋਹ ਨਹੀਂ ਤੈਠਾਉ ਨਾ ਤਸਵੀਜ਼ ਖਰਾਜ਼ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੈਂ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਕਰ ਅਨੰਦ ਸੱਚਾ ਮਨ ਸੋਏ ਖੈਰ ਨਦਰੀ ਨਦਰ ਨਿਹਾਲ ਆ ਉੱਥੇ ਗੁਰੂ ਜੀ ਕਹਿ ਰਹੇ ਇੱਕ ਸ਼ਬਦ ਗੁਰੂ ਅਰਜੁਨ ਦੇਵ ਦਾ ਇਸ ਅਵਸਥਾ ਦਾ ਹੋਇ ਤਾਂ ਬਾਣੀ ਚ ਬਚਨ ਬੜੇ ਸੂਖ ਮੈਲ ਜਾ ਕੇ ਊਚ ਦੁਆਰੇ ਜਿਹਨੂੰ ਗੁਰੂ ਜੀ ਸੱਚਖੰਡ ਕਹਿੰਦੇ ਆ ਭਗਤ ਰਵਿਦਾਸ ਸਾਹਿਬ ਬੇਗੰਪੂਰਾ ਕਹਿੰਦੇ ਆ ਉਹਨੂੰ ਗੁਰੂ ਅਰਜੁਨ ਦੇਵ ਸੂਖ ਮੈਲ ਕਹਿੰਦੇ ਸੂਖ ਮਹਿਲ ਜਾਂਕੇ ਊਚ ਦਵਾਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਦੀਠੀ ਮਹਾਰਾਜ ਕਹਿੰਨੇ ਉੱਥੇ ਬਖਸ਼ਿਸ਼ ਕੈ ਕਈ ਲੋਕਾਂ ਦੇ ਨੇ ਜੀਵ ਭਗਤ ਸੂਖ ਮਹਿਲ ਜਾਂਕੇ ਉਚ ਦਵਾਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਨੇਤਰੋਂ ਦੀਠੀ ਤੈ ਗੀਤ ਨਾਦ अखारे संगा तिथै नाद विनोद कोड आनंद महाराज कहंदे ते गीत नाद अखारे संगा उहां संत कर रंगा त मरना जीवन ना ओह मरए ना ठगे जाए त मरना जीवन सोख ना हरखा सांच नाम की अमृत बरखा गोज कथा ए गुरते जांदी कहंदे ए अवस्था ਗੁਰੂ ਕੋਲੋਂ ਮਿਲੀ ਗੁਰੂ ਜੀ ਕਹਿੰਦੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਬਣਾਉਂਦਾ ਸੰਭਾਲਦਾ ਨਦਰ ਨਿਖਾਲ ਤਿੱਥੈ ਖੰਡ ਮੰਡਲ ਵਰਪੰਟ ਕਹਿੰਦੇ ਉੱਥੇ ਬਹੁਤ ਖੰਡ ਨੇ ਬਹੁਤ ਮੰਡਲ ਨੇ ਬ੍ਰਹਮੰਡਾਂ ਦੇ ਬ੍ਰਹਮੰਡ ਨੇ ਕੈਸੀ ਸੂਰਤ ਹੋਵੇਗੀ ਜੀ ਨਾ ਫਿਰ ਅਰਜ਼ ਕੀਤੀ ਮੈਂ ਤਾਂ ਹੀ ਅਰਥ ਕਰਾਂਗਾ ਜੁ ਲਿਖਿਆ ਕਿਉਂਕਿ ਖੁਦ ਵੇਖਣਹਾਰਾ ਦਾਤਾ ਕਹ ਰਿਹਾ ਜੇ ਕੋ ਕਥ ਹੈ ਤਾਂ ਅੰਤਨੰਤ ਜਿਹੜਾ ਇਹ ਕਥਾ ਕਰੇਗਾ ਤਾਂ ਅੰਤ ਕਿੱਥੇ ਪਾਏਗਾ ਇਹ ਨਰੋਲ ਅਨਪਵਤੇ ਅਨਪਵਿਓਦਾ ਜਿਹੜਾ ਕਹ ਰਿਹਾ ਨੇ ਬਾਬਾ ਪੈਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਗੁਰੂ ਜੀ ਕਹ ਰਿਹਾ ਨੇ ਕਿ ਤਿਥੈ ਖੰਡ ਮੰਡਲ ਵਰਪੰਡ ਖੰਡਲ ਨੇ ਮੰਡਲ ਨੇ ਵਰਪੰਡ ਨੇ ਜੇ ਕੋ ਕਥ ਹੈ ਤਾਂ ਅੰਤਨੰਤ ਜੇ ਕੋਈ ਇਨੂੰ ਕਥਨ ਦਾ ਯਤਨ ਕਰੇ ਦਾ ਅੰਤ ਨਹੀਂ ਪਾਸਕਦਾ ਤਿੱਥੈ ਲੋ ਲੋ ਆਕਾਰ ਉਥੇ अनेका ਲੋਕ ਨੇ ਉਥੇ ਆਕਾਰ ਨੇ ਹੁਣ ਇਹ ਗੱਲ ਨਾ ਮੈਂ ਹੁਣ ਨਹੀਂ ਕਰਾਂਗਾ ਫਿਰ ਕਿਸੇ ਕਿਸੇ ਗੁਰਮਖ ਪਿਆਰੇ ਦੀ ਸੰਗਤ ਕਰਕੇ ਮੇਰੇ ਮਨ ਚ ਆਇਆ ਵੀ ਇੱਕ ਪਾਸੇ ਕਹਿ ਦਿੱਤਾ ਸੱਚਖੰਡ ਵਸੈ ਨਿਰੰਕਾਰ ਇੱਥੇ ਕਹਿ ਦਿੱਤਾ ਆਕਾਰ ਵਸਦਾ ਨਿਰੰਕਾਰ ਹੈ ਪਰ ਗੁਰੂ ਜੀ ਕਹਿੰਦੇ ਤਿਥੈ ਲੋ ਲੋ ਆਕਾਰ ਉਥੇ ਢਾਂਚਾ ਹੈ ਨਿਰੰਕਾਰ ਆਕਾਰ ਸਮਝ ਨਹੀਂ ਪੈਂਦੀ ਪਿਮਨ ਚ ਅਰਥ ਮੈਂ ਘਰ ਚੱਲਿਆ ਵਾ ਜਿਵ ਜਿਵ ਹੁਕਮ ਤੇ ਵਹਿ ਤੇ ਵਿਕਾਰ ਹੁਣ ਇਹਦਾ ਮਤਲਬ ਇਹ ਹੋਇਆ ਕਿ ਉਹ ਜਿਹੜਾ ਕਾਰ ਚਲਾ ਰਿਹਾ ਜਿਹੜਾ ਸੱਚਖੰਡ ਚ ਬੈਠਾ ਉਹਨੂੰ ਸਥਾਨਵਾਚਕ ਵੀ ਨਹੀਂ ਕੇਵਲ ਕਹਿ ਸਕਦੇ ਜਿਸ ਸਥਾਨਵਾਚਕਾਂਗ ਤੇ ਇੱਕ ਦੇਸੀ ਹੋ ਜਾਏਗਾ ਫਿਰ ਕਨਸੈਪਟ ਆ ਜਾਏਗਾ ਅੱਲਾ ਦਾ ਸਤਵੇਂ ਆਕਾਸ਼ ਤੇ ਬੈਠਾ ਹੈ ਇਹ ਸਥਾਨਵਾਚੀ ਵੀ ਨਹੀਂ ਪਰ ਗੁਰੂ ਜੀ ਕਹਿੰਦੇ ਨੇ ਕਿ ਦੇਖੋ ਤਿਥੈ ਲੋ ਲੋ ਆਕਾਰ ਇਹਦਾ ਮਤਲਬ ਜਿਹੜਾ ਕਰ ਕਰ ਹੈ ਫਿਰ ਸੁਣਿਓ ਇਹਦੇ ਅਰਥ ਗੁਰੂ ਸਾਹਿਬ ਜਿੰਨੀ ਕੁ ਸੋਝੀ ਦੇ ਰਿਹਾ ਕਰ ਕਰ ਵੇਖ ਹੈ ਜਿਹੜਾ ਕਰ ਰਿਹਾ ਹੈ ਸੰਭਾਲ ਰਿਹਾ ਉਹਦੇ ਕਰਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਕਿੰਨੇ ਕੋ ਆਕਾਰ ਸਿਰਜੇ ਜਾ ਰਿਆ ਜੋ ਕੋ ਸਿਰਜ ਰਿਆ ਜਿਬ ਜੁ ਹੁਕਮ ਤਿ ਵਹਿ ਤਿ ਵਿਕਾਰ ਮੇਰੀ ਬੇਨਤੀ ਫਿਰ ਸੁਣੇ ਦਾ ਮਤਲਬ ਹੈ ਨਿਰਾਕਾਰ ਆਕਾਰ ਲੋ ਲੋ ਆਕਾਰ ਜਿਬ ਜੁ ਹੁਕਮ ਜਿਨੂੰ ਅਸੀਂ ਆ ਦੂਜੀ ਪੌੜੀ ਚ ਪੜ ਕੇ ਐਸਾ ਹੁਕਮ ਹੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਖੋਵਣ ਜੀ ਹੁਕਮ ਲੈ ਬੜਿਆ ਜਿਨੂੰ ਪੜ ਕੇ ਐਸਾ ਹੁਕਮ ਹੈ ਅੰਦਰ ਸਭ ਕੋ ਫਿਰ ਗੁਰੂ ਜੀ ਉਸ ਪੌੜੀ ਚ ਲੈ ਗਏ ਉਹ ਪੌੜੀ ਇੱਥੇ ਆ ਗਈ ਜਿਬ ਜਿਬ ਹੁਕਮ ਤਿ ਵੈ ਤਿ ਕਾਰ ਵੇਖੈ ਵੇਖੇ ਨਦਰ ਤੇ ਸੰਭਾਲਦਾ ਕਿਉਂਕਿ ਇਹ ਇਹ ਇਹ ਸ਼ਬਦ ਉੱਤੇ ਵੀ ਆ ਚੁੱਕਿਆ ਕਰ ਕਰ ਵੇਖੈ ਨਦਰ ਨਿਖਾਲ ਨਦਰ ਭਰੀ ਦ੍ਰਿਸ਼ਟੀ ਨਾਲ ਨਿਹਾਲਤਾ ਦੇ ਰਿਹਾ ਫਿਰ ਸ਼ਬਦ ਆ ਗਿਆ ਵੇਖੈ ਉਹ ਸੰਭਾਲਦਾ ਵਿਗਸੈ ਕਰ ਵਿਚਾਰ ਸਮਵਾਲਦਾ ਤੇ ਵਿਗਸੈ ਦਰਤ ਆਨੰਦ ਚੰਦਾ ਖੁਸ਼ ਹੁੰਦਾ ਹੁਣ ਇਹਨੂੰ ਫਿਰ ਚੱਲੀਏ ਪਿੱਛੇ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਂਏ ਹੁਕਮੇ ਹੁਕਮ ਚਲਾਏ ਰਾਹੋ ਅੱਗੇ ਕੀ ਹੈ ਨਾਨਕ ਵਿਗਸੈ ਫਿਰ ਉੱਥੇ ਆ ਗਏ ਜਿਬ ਜਿਬ ਹੁਕਮ ਤਿਵਾ ਤੇ ਵਕਾਰ ਵਿਗਸ ਉਹ ਇਹ ਨਹੀਂ ਕਹਿੰਦਾ ਵੀ ਮੈਨੂੰ ਇਹ ਇਹ ਸਿਆਪਾ ਬਣ ਗਿਆ ਸੱਚੀ ਗੱਲ ਆਮ ਬੰਦਾ ਕਲਪ ਹੀ ਜਾਂਦਾ ਵੀ ਹੁਣ ਤੇ ਥੱਕ ਗਿਆ ਇਹ ਪਤਾ ਨਹੀਂ ਸਿਆਪਾ ਕਦੋਂ ਮਗਰੋਂ ਲੈਣਾ ਬੜੇ ਸ਼ਬਦ ਸੀ ਮਹਾਰਾਜ ਕਹਿੰਦੇ ਨੇ ਇੰਨਾ ਕੁਝ ਰਚੀ ਬੈਠਾ ਫਿਰ ਖੁਸ਼ਦਾ ਖੁਸ਼ ਰਹਿੰਦਾ ਕਦੀ ਉਹਦੇ ਚਿਹਰੇ ਤੇ ਗਮੀ ਨਹੀਂ ਆਈ ਕਦੀ ਕਿਸੇ ਕੋਲ ਝੁਰਦਾ ਨਹੀਂ ਕਦੀ ਚਿੰਤਾ ਨਹੀਂ ਕਰਦਾ ਵਾਹ ਵਾਹ ਕੈਸੀ ਪਰਮ ਅਵਸਥਾ ਹੈ ਵੇਖ ਕੇ ਵਿਗਸ ਕਰ ਵਿਚਾਰ ਗੁਰੂ ਜੀ ਹੁਣ ਦੱਸਣ ਤੇ ਲੱਗੇ ਹੋ ਨਾ ਤੁਸੀਂ भी ਸੱਚਖੰਡ ਵਸੈ ਨਰੰਕਾਰ ਤੁਸੀਂ ਕਹਿ ਦਿੱਤਾ ਤਿੱਥੈ ਭਗਤ ਵਸੈ ਕੇ ਲੋ ਕਰਾਂ ਅਨੰਦ ਸਚਾ ਮਨ ਸੋਏ ਸੱਚਖੰਡ ਵਸ ਹੁਣ ਥੋੜੀ ਜੀ ਕਿਰਪਾ ਕਰੋ ਹੋਰ ਦਸੋ ਅੱਗੇ ਇਹਨੂੰ ਖੋਲ ਦਿਓ ਜਿਵੇਂ ਤੁਸੀਂ ਉੱਥੇ ਕਿਹਾ ਨਾ ਵੀ ਅੰਮ੍ਰਿਤ ਵੇਲਾ ਸੱਚ ਨਾਂਉ ਖੋਲ ਦਿੱਤਾ ਨਾ ਹੁਣ ਇਹਨੂੰ ਖੋਲੋ ਹੋਰ ਦਸੋ ਗੁਰੂ ਜੀ ਨਿਮਰਤਾ ਦੀ ਮੂਰਤ ਕਹਿੰਦੇ ਨਾਨਕ ਕਥਨਾ ਕਰੜਾ ਸਾਰ ਕਹਿੰਦੇ ਤੁਸੀਂ ਬਖਸ਼ ਦਿੱਤੀ ਸਾਨੂੰ ਜਪ ਮੈਂ ਸਕਲ ਕੇ ਜ਼ੋਰ ਦੇ ਰਿਆਂ ਗੁਰਮਖੋ ਇਸ ਜਪਤੀ ਪੂਰਾ ਪੈਰਾ ਦੇ ਦਈਏ ਮੈਂ ਅਰਥ ਜ਼ਰੂਰ ਕੀਤੇ ਨੇ ਅਰਥ ਤਾਂ ਟਿਕਿਆਂ ਵਿੱਚ ਵੀ ਬਹੁਤ ਨੇ ਅਰਥ ਅਸੀਂ ਗਿਆਨੀਆਂ ਬਹੁਤ ਕੀਤੇ ਪਰ ਇਸ ਅਵਸਥਾ ਨੂੰ ਤੇਰੀ ਬਖਸ਼ਿਸ਼ ਹੋਵੇ ਤਾਂ ਮੰਨਿਆ ਜਾਏਗਾ ਕਲ ਅਰਥਾਂ ਨਾਲ ਥੋੜਾ ਮੰਨ ਸਕਣਾ ਨਾਨਕ ਕਥਨਾ ਕਰੜਾ ਅਰਥੀ ਪੀੜਾ ਦਾਦਾ ਇੱਥੇ ਸਾਰ ਦਾ ਲਬਜ਼ੀ ਅਰਥ ਤੇ ਲੋਇਆ ਮੇਰੀ ਬੇਨਤੀ ਸੁਣੋ ਇੱਥੇ ਸਾਰ ਦਾ ਅਰਥ ਇਹ ਇਹ ਸਾਰਾਂਸ਼ ਵੀ ਹੁੰਦਾ ਹੈ ਤਤ ਵੀ ਹੁੰਦਾ ਇੱਥੇ ਸਾਰ ਦਾ ਅਰਥ ਤੇ ਜਿਵੇਂ ਇੱਕ ਪਾਠ ਅਸੀਂ ਇੱਕ ਦਿਨ ਕੀਤਾ ਸੀ ਕਹਾਂ ਕੰਚਨ ਟੁੱਟੇ ਸਾਰ ਸਾਰ ਦਾ ਅਰਥ ਲੋਇਆ ਇੱਥੇ ਗੁਰੂ ਜੀ ਕਹਿੰਦੇ ਨੇ ਤੁਸੀਂ ਪੁੱਛ ਰਹੇ ਹੋਰ ਅੱਗੇ ਦੱਸ ਹੋਰ ਅੱਗੇ ਬੋਲ ਕਹਿੰਦੇ ਪੰਜ ਖੰਡ ਕਹਿ ਦਿੱਤੇ ਜਿੰਨੀ ਸਮਝ ਪਈ ਪਰ ਇਹ ਵੀ ਜਿੰਨੀ ਸਮਝ ਪਈ ਮੈਂ ਸ਼ਬਦ ਕਹਿ ਰਿਹਾ ਪਰ ਬਾਬਾ ਜੀ ਲਈ ਇਹ ਸਭ ਕੁਝ ਹੈ ਮਹਾਰਜ ਕਹਿੰਦੇ ਨੇ ਤੁਸੀਂ ਕਹਿ ਰਹੇ ਹੋ ਹੋਰ ਬੋਲ ਕੀ ਬੋਲਾਂ ਲੋਹੇ ਦਾ ਇੱਕ ਨਿੱਕਾ ਜਿਹਾ ਡਲੀ ਲੈ ਕੇ ਮੈਨੂੰ ਕਹੋ ਆਪਣੇ ਦੰਦਾਂ ਨਾਲ ਚਬਾ ਜਿਵੇਂ ਬੰਦਾ ਲੋਹੇ ਨੂੰ ਦੰਦਾਂ ਨਾਲ ਨਹੀਂ ਖਾ ਸਕਦਾ ਚਬਾ ਨਹੀਂ ਸਕਦਾ ਇਹਨੂੰ ਬਿਆਨ ਕਰਨਾ ਇਸ ਤਰ੍ਹਾਂ ਜਿਵੇਂ ਲੋਹਾ ਚਬਾਣਾ ਹੈ ਨਾਨਕ ਕਥਨਾ ਕਰੜਾ ਸਾਰ ਇਹ ਲੋਹਾ ਹੈ ਪਰ ਅੱਗੇ ਗੁਰੂ ਜੀ ਨੇ सारे ਜਪਜੀ ਸਾਹਿਬ ਦਾ ਨਿਚੋੜ ਦਿੱਤਾ ਹੈ 78ਵੀਂ ਪੌੜੀ ਚ ਹੁਣ ਸਾਡੀ ਅਵਸਥਾ ਮਹਾਰਾਜ ਤੁਸੀਂ ਅਸੰਖ ਕਹਿੰਦੇ ਹੋ ਸੰਖਾ ਕਹੀ ਜਾਂਦੇ ਹੋ ਇੰਨੇ ਡੂੰਗੇ ਸ਼ਬਦ ਪਰ ਗੁਰੂ ਜੀ ਕਹਿੰਦੇ ਨੇ ਮੈਂ ਜਿਵੇਂ ਤੈਨੂੰ ਚੌਥੀ ਪੌੜੀ ਚ ਦੱਸਿਆ ਸੀ ਨਾ ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਹੁਣ ਮੈਂ ਤੈਨੂੰ 78ਵੀਂ ਪੌੜੀ ਚ ਦੱਸਣ ਲੱਗਾ ਤੇ ਜਿਹੜਾ ਦਸਵੇਂ ਜਾਮੇ ਉਹਦੀ ਰੈਤ ਦਾ ਜਿਹੜਾ ਨਕਸ਼ਾ ਹੈ ਉਹ 87ਵੀਂ ਪੌੜੀ ਹੈ ਜੱਤ ਪਹਾਰਾ ਧੀਰੇ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਇਹ ਸਾਰੇ ਦੇ ਸਾਰੇ ਬਚਨ ਗੁਰੂ ਜੀ ਬਖਸ਼ਿਸ਼ ਕਰਨ ਆਪਾਂ ਰਾਤ ਦੇ ਦੀਵਾਨ ਵਿੱਚ 87ਵੀਂ ਪੌੜੀ ਤੇ ਜਿਹੜਾ ਸ਼ਲੋਕ ਹੈ ਅਖੀਰ ਵਾਲਾ ਇਹਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਮੇਰੇ ਤੋਂ ਬੇੰਤ ਪੁੱਲਾਵੀਆਂ ਨੇ ਗੁਰਮਖੋ ਬਖਸ਼ ਦਿਓ